शलोक महला पहला पहला मासो निम्या मासे अंदर वास जियो पाए मास मुह मिलिया हड़ चम तन मास ओ जी पहला जदा जदे गर्भ जाया मासो डिबे डिबेलन निर्वान शुरू होया जब बढ़ना शुरू होता है शरीर उने डिभया कहते हैं ਮਾਚੇਂ ਦਰਵਾਸ ਫਿਰ ਬਾਸ ਵੱਡਾ ਗਿਆ ਸ਼ਰੀਰ ਬਣਦਾ ਗਿਆ ਬਾਗ ਦੇ ਵਿੱਚ ਦਰਵਾਸ ਹੋ ਗਿਆ ਇਹਦਾ ਜੀਵ ਦਾ ਬਾਚੇਂ ਦਰਵਾਸ ਹੋ ਗਿਆ ਜੀਵ ਪਾਇ ਵਿੱਚ ਜੀ ਪਾਇਆ ਹੋਇਆ ਨਾ ਆਪਣਾ ਜੀ ਆਪਣਾ ਮਨ ਪਾਇਆ ਹੋਇਆ ਹੈ ਜਿਹਨੂੰ ਪ੍ਰਭ ਕਹਿੰਦੇ ਆ, ਮੂਲ ਕਹਿੰਦੇ ਹਰ ਕਹਿੰਦੇ ਉਹਨੇ ਹਰ ਜੀ ਗੁਫਾ ਦੇ ਰੱਖ ਕੇ ਬਾਜਾ ਪਵਨ ਵਜਾਇਆ ਬਾਜਾ ਪਵਨ ਦਾ ਹਰ ਵਜਾਉਂਦਾ ਸਾਰੇ ਹੱਲ ਦੇ ਇਹਨੂੰ ਪਾਇਆ ਹੋਇਆ ਹੈ ਇਹਦੇ ਵਿੱਚ ਗੁਫਾ ਦੇ ਵਿੱਚ ਗੋਇ ਮਿਲਿਆ ਮਾਸ ਦਾ ਮੁੰਰੇ ਨੂੰ ਜਿਉਂ ਦੇ ਕੋਲ ਮਾਸ ਕੜਾ ਮੇਰਾ ਮਾਸਾ ਹੀ ਹੈ ਮੈਂ ਬੜਿਆ ਹੱਡ ਚੰਬ ਤਨ ਆਹ ਜਿਹੜਾ ਹੱਡ ਨੇ ਚੰਬ ਦੇ ਤਨ ਹੈ ਜਿਹੜਾ ਇਹ ਵਾਹਲਾ ਇਹਦਾ ਮਾਸ ਹੈ ਜਿਹੜੇ ਮਾਸ ਖਾਣ ਤੋਂ ਖਰਾਬ ਕੀ ਉਹਨਾਂ ਨਾਲ ਕਿੱਥੇ ਉਹਨੂੰ ਗੱਜ਼ਰੇ ਵੀ ਬਾਸ ਤੋਂ ਤੁਸੀਂ ਇੰਦੀ ਨਫ਼ਰਤ ਕਿਉਂ ਕਰਦੇ ਆਂ ਤੇ ਸਰੀਰ ਹੈ ਬਾਸ ਦਾ ਸਾਰਾ ਬਾਸ ਨਾਲ ਗੱਡੀ ਚੱਲਦੀ ਹੈ ਬਾਸ ਦੇ ਸਰੀਰ ਦੇ ਵਿੱਚ ਨਫ਼ਾ ਹੈ ਜਿਹੜਾ ਜਿਹਨੂੰ ਪਦਾਰਥ ਮਿਲਣਾ ਨਾ ਚਾਰੇ ਪਦਾਰਥ ਬਾਸ ਤੋਂ ਬਿਨਾਂ ਮਿਲਣਾ ਹੀ ਨਹੀਂ ਤੁਹਾਨੂੰ ਇੰਨੇ ਇੰਪੋਰਟੈਂਟ ਵਧੀਆ ਚੀਜ਼ ਨੂੰ ਤੁਸੀਂ ਨਫ਼ਰਤ ਕਰਨ ਲੱਗੇ ਤੁਹਾਨੂੰ ਅਕਲ ਕਿੱਥੇ ਜਾਂਦੀ ਅਕਲ ਅਸਲ ਤੇ ਲਈ ਹੋਦੀ ਦੇਣ ਵਾਲਿਆਂ ਨੇ ਕੰਤ ਤੇਰੇ ਨੇ ਨਾਂਣ ਦਿਖਾ ਦਿੱਤੀ ਹਾਂਜੀ ਮਾਸੋ ਬਾਹਰ ਕੱਢਿਆ ਮੰਮਾ ਮਾਸ ਗ੍ਰਾਸ ਮੂੰਹ ਮਾਸ ਹੈ ਕਾ ਜੀਬ ਮਾਸ ਹੈ ਕੀ ਮਾਸੇ ਅੰਦਰ ਸਾਸ ਮਾਸੋ ਬਾਹਰ ਕੱਢਿਆ ਮਾਦੇ ਜੋ ਬਾਹਰ ਆ ਗਿਆ ਜਦ ਮਾਦਾ ਸਰੀਰ ਵੀ ਤਾਂ ਮਾਸ ਹੀ ਹੈ ਨਾ ਆਪਣੀ ਹੀ ਜਾਨੀ ਬਾਹਰ ਕੱਢਿਆ ਮਾਦਾ ਸਰੀਰ ਮਾਸ ਦਾ ਹੀ ਸੀ ਜਿੱਚੋਂ ਮਾਸੋਂ ਹੀ ਮਾਸੁੱਪ ਗਿਆ ਇਹਦਾ ਸਰੀਰ ਪੈਦਾ ਹੋਇਆ ਉਹ ਜੋ ਬਾਹਰ ਖੜ ਲਿਆ ਬੱਬਾ ਦਾਸ ਦਾ ਰਾਸ ਜਿਹੜਾ ਬੂਹੇ ਦੇ ਵਿੱਚ ਦਿੱਤਾ ਮਾ ਦਾ ਸਤੰਦ ਬੱਬਾ ਜਿਹਨੂੰ ਕਹਿੰਦੇ ਨੇ ਉਹ ਵੀ ਮਾਸ ਦਾ ਹੀ ਰਾਸ ਮਿਲਿਆ ਤੁਹਾਨੂੰ ਉਹ ਦੁੱਧ ਵੀ ਬਾਸ ਹੀ ਆ ਜਿਹੜਾ ਮਿਲਿਆ ਰਾਸ ਬੂਹੇ ਦੇ ਤਾਂ ਮਾਸੇ ਪੈਣ ਰਾਸ ਤੋਂ ਉਹ ਤਾਂ ਵੱਧ ਦੀ ਗੱਲ ਐ ਤੁਹਾਨੂੰ ਜੇ ਗਰਾਸ ਲੈਣ ਲੱਗਿਆ ਆਪਣੇ ਬੂਹੇ ਦੇ ਵਿੱਚ ਉੰਗਣ ਲੱਗਿਆ ਤਾਂ ਬਾਸ ਹੀ ਫੜਿਆ ਰੂਹ ਦੇ ਵਿੱਚ ਜਿਹੜਾ ਮਾਸ ਪਾਇਆ ਉਹ ਵੀ ਆਦਮੀ ਦਾ ਚਲੋ ਲੋ ਇਸਤਰੀ ਹੋਈ ਆਦਮੀ ਹੋਈ ਸਰੀਰ ਵਸਤਾ ਇੱਕੋ ਹੀ ਹੈ ਉਹ ਨੂੰ ਬੁਰਾ ਨਹੀਂ ਸਮਝਿਆ ਮੂ ਵੀ ਵਸਦਾ ਭਾਈ ਤੇਰੀ ਸਾਹ ਆਉਂਦਾ ਹੈ ਅੰਦਰ ਆਉਂਦਾ ਹੈ ਸੱਸ ਸਾਹ ਨਹੀਂ ਉੜਦਾ ਜਿੰਨਾ ਚਿਰ ਮਾਸ ਦਾ ਹੱਦ ਚ ਸਰੀਰ ਹੈ ਨਾ ਉਹਨਾਂ ਚਿਰ ਸਾਹ ਹੈ ਹਾਂਜੀ ਵੱਡਾ ਹੋਆ ਵਿਆਹ ਆ ਕਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਭਾ ਜੀ ਵੱਡਾ ਹੋਇਆ ਵਿਆਹ ਲੈ ਆਇਆ ਵਿਆਹ ਕੇ ਲੈ ਆਇਆ ਵਿਆਹ ਹੋ ਗਿਆ ਕਾਰ ਕੀ ਲਾਇਆ ਮਾਸ ਸਰੀਰ ਲੈ ਕੇ ਆਇਆ ਸਰ ਸਰੀਰ ਕਰਕੇ ਵਿਆਹ ਕੀਤਾ ਆਤਮਾ ਨਹੀਂ ਲੈ ਕੇ ਆਇਆ ਆਤਮਾ ਤਾਂ ਕਿਉਂਕਿ ਸੁਲਤਾਨ ਚਲਾਉਣੀ ਸੀ ਪੀੜੀ ਚਲਾਉਣੀ ਸੀ ਕੱਲ ਆਇਆ ਆ ਮਾਸ ਸਸੋਹੀ ਮਾਸੋ ਪਿਆ ਹੁਣ ਮਾਸ ਤੋਂ ਹੀ ਇਨਸਾਨ ਬੱਚੇ ਮਾਸ ਦਾ ਹੀ ਪੈਦਾ ਹੋਊਗਾ ਫਾਸਾ ਸਭੇ ਸਾਡੇ ਜਿਹੜੇ ਸਾਡੇ ਰਿਸ਼ਤੇ ਨੇ ਵੀ ਮਾਸ ਦੇ ਹੀ ਨੇ ਅੱਜ ਦੇ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਆਪਾਂ ਕਹਿੰਦੇ ਯਾਰ ਰਿਸ਼ਤੇ ਖੂਨ ਦੇ ਨੇ ਖੂਨ ਨਾਲ ਆਪੇ ਮਾਸ ਹੈ ਖੂਨ ਦੇ ਪਰ ਬਾਕੀ ਦਾ ਕੋਈ ਫਰਕ ਨਹੀਂ ਫਾਸਾ ਸਭੇ ਇਹ ਮਾਸ ਦੇ ਰਿਸ਼ਤੇ ਨੇ ਆਤਮ ਦੇ ਰਿਸ਼ਤੇ ਨਹੀਂ ਹੋਣੇ ਆਤਮ ਦੇ ਰਿਸ਼ਤੇ ਨਹੀਂ ਹੋਣੇ ਆਤਮਾ ਦਾ ਰਿਸ਼ਤਾ ਨਾਨਕ ਦਾ ਨਾਲ ਆਪਣੇ ਬਾਪ ਨਾਲ ਹੈ ਨਾ ਤਾਂ ਗੁੱਡੇ ਨਾਲ ਹੈ ਨਾ ਤਾਂ ਨਾਲ ਆਤਮਾ ਦਾ ਰਿਸ਼ਤਾ ਲੱਗ ਆਤਮਾ ਦਾ ਰਿਸ਼ਤਾ ਕਿਹਦੇ ਪਿਆ ਆਤਮਾ ਦਾ ਰਿਸ਼ਤਾ ਲੈਣੇ ਨਾਲ ਪਿਆ ਲੈਣੇ ਨਾਲ ਖੋ ਗਿਆ ਹੋਰ ਨਾਲ ਪਿਆ ਚਲੋ ਬਾਪੇ ਗੁੱਡੇ ਨਾਲ ਵੀ ਪਿਆ ਹੋਰ ਨਾਲ ਵੀ ਪਿਆ ਜਿਹੜੇ ਡੇੜੇ ਆਏ ਜਿਹੜੇ ਕੋਲ ਰਹੇ ਉਹਨਾਂ ਨਾਲ ਵੀ ਪਿਆ ਕੁਝ ਖਾਣਾ ਪਿਆ ਜਿਹੜੇ ਮਗਲ ਲੱਗੇ ਜਿਹਦੀ ਗੱਲ ਬੁੱਲੀ ਉਹਨਾਂ ਨਾਲ ਪਿਆ ਹਾਂਜੀ ਸਤਗੁਰ ਮਿਲਿਆ ਹੁਕਮ ਬੁੱਝੀਏ ਤਾਂ ਕੋ ਆਵੇ ਰਾਸ ਸਤਿਗੁਰ ਕੋਈ ਮਿਲ ਜਵੇ ਸੱਚ ਦਾ ਜਾਣਨ ਵਾਲਾ ਮਿਲ ਜਵੇ ਸਤਿਪੁਰਖ ਜਾਣ ਲਿਆ ਹੋਵੇ ਕੋਈ ਆਪਣੇ ਚਵੇ ਮਿਲ ਜਵੇ ਨਾ ਮਿਲਣਾ ਆ ਨਹੀਂ ਹੈਗਾ ਬਾਸ ਕਰਕੇ ਸਰੀਰ ਕਰਕੇ ਨਾ ਮਿਲੇ ਅੰਤਰਾਤਮਾ ਜੇ ਮਿਲੇ ਮਿਲੇ ਅੱਗੇ ਸੋਈ ਅੰਤਰਾਤਮਾ ਉਹ ਸਤਿਗੁਰ ਨਾਲ ਮਿਲ ਜਵੇ ਤੇਰੀ ਹੁਕਮ ਬੁੱਝੀਏ ਤਾਂ ਹੁਕਮ ਬੁੱਝੀ ਜਾਏ ਫਿਰ ਹੁਕਮ ਬੁੱਝੂਂਦਾ ਤਾ ਕੋ ਆਵੇ ਰਾਹ ਫਿਰ ਕਿਸੇ ਨੂੰ ਗੱਲ ਫਟਾਉਂਦੀ ਹੈ ਹਮਾਸਾ ਸਭੇ ਸਾਹ ਕਾਲੀ ਗੱਲ ਫਟੜੀ ਹੋਣੀ ਜਿਹੜੀ ਅਸੀਂ ਕਹਿਤਾ ਬਾਸੇ ਬਾਸ ਸੁਪ ਜਾਣਾ ਇਹ ਗੱਲ ਨਹੀਂ ਬਣਣੀ ਲੋਕਾਂ ਦੇ ਕਹਿੰਦਾ ਨਾਨਕ ਤਾਂ ਕਬਰियां ਮਾਰਦਾ ਫੇਰ ਆਵੇ ਰਾਹ ਫਿਰ ਸਮਝਾਉਗੀ ਨਹੀਂ ਤਾਂ ਪੁੰਨ ਪਾਪ ਚ ਫਸੇ ਨੇ ਸਾਰੇ ਪੁੰਨ ਪਾਪ ਸਾਡੇ ਵਸ ਨਹੀਂ ਇਹ ਤਾਂ ਸਤਗੁਰੂ ਸਮਝਾਉਣਾ ਗੱਲ ਨੂੰ ਤਾਂ ਇਹਦਾ ਪਰਪ ਤਾਂ ਉਹ ਤੋੜੂਗਾ ਉਹ ਕਹ ਬੁੱਝੂਗਾ ਵੀ ਸਾਡੇ ਮੇਰੇ ਉਹਨਾਂ ਦੀ ਕੁਝ ਹੁੰਦਾ ਜੇ मेरे ਹੁਕਮ ਨਾਲ ਕੋਈ ਪਾਪ ਹੁੰਦਾ ਤਾਂ ਪਰਮੇਸ਼ਰ ਦਾ ਹੁਕਮ ਕਿੱਥੇ ਰਹਿ ਗਿਆ ਤਾਂ ਉਹ ਕੋ ਬੁਝੇ ਤਾਂ ਕੋ ਆਵੇ ਰਾਸੇ ਰੋਣੂਏ ਗੱਲ ਸਾਡੀ ਕਹੀ ਹੋਈ ਗੱਲ ਉਹਨੂੰ ਰਾਸ ਆਊਗੀ ਵਰਨਾ ਇਹ ਗੱਲ ਰਾਸੇ ਨਹੀਂ ਹੋਣੀ ਕਿਸੇ ਨੂੰ ਹਾਂਜੀ ਆਪ ਛੁੱਟੇ ਨਹਿ ਚੂਟੀਐ ਨਾਨਕ ਬਚਨ ਤੇ ਮੈਂ ਆਪਣੇ ਅbschud tu ਵਾਲਾ ਫੇਰ ਤੇ ਅਸਮੰਦੀ ਲਾ ਕੇ ਐਡਾ ਕੋਈ ਨਾ ਛੁੱਟਿਆ ਨਾ ਛੁੱਟ ਸਕਦਾ ਜੋਰ ਨਾ ਜੁਗਤੀ ਜੋਰ ਬਿਸ਼ੂ ਦਾ ਰਾਜੇ ਦਾ ਜੋਰ ਹੈ ਉਹ ਜਦ ਰਾਜੇ ਆਗੇ ਜਦ ਮਹਾਰਾਮ ਚੰਦਰ ਆ ਗਿਆ ਕ੍ਰਿਸ਼ਨ ਆ ਗਿਆ ਹੋਰ ਬਿਸ਼ੂ ਨੂੰ ਵੀ ਬਿਸ਼ੂ ਦੇ ਅਵਤਾਰ ਆ ਗਏ ਉਹਨਾਂ ਕੋਲ ਸ਼ਕਤੀ ਹੈ ਜੋਰ ਹੈ ਤੇ ਅਸ਼ਵਜੀ ਕੋ ਜੁਗਤੀ ਹੈ ਇਹਨਾਂ ਕੋਲ ਜੁਗਤੀ ਹੈ ਜਿਹੜੇ ਆਪਣੇ ਸਿੱਧਰੇ ਉਸ ਵੇਲੇ ਇਹ ਦੋਏ ਤਿੰਨ ਤੇ ਦੋ ਇੰਚ ਛਟਾ ਸਕਦੇ ਸੰਸਾਰ ਤੋਂ ਜੋਰ ਨਾਲ ਯੁਗਤੀ ਛਟਾ ਸਕਦਾ। ਆਪ ਕੋਸ਼ਿਸ਼ ਕਰਦੇ ਨੇ ਸਤਗੁਰ ਤੇ ਡਿਪੈਂਡ ਕਰਦੇ। ਸਤਗੁਰ ਦਾ ਇੰਤਜ਼ਾਰ ਨਹੀਂ ਕਰਦੇ, ਵਚਨ ਨਹੀਂ ਮੰਨਦੇ। ਕੁਰਬਾਨੀ ਦੇ। ਚਰਕੀ ਵਾਲੇ ਨੂੰ ਇਹ ਮਿਹਰਬਾਨੀ ਨਹੀਂ ਮਿਲਦੇ ਇਹ। ਜਿਹੜੇ ਬੱਚੇ ਦੇ ਇਹਨਾਂ ਦੇ। দানਕ ਵਚਨ ਵਚਨ ਨਹੀਂ ਜਿਹੜੇ ਉਹਨਾਂ ਦੇ ਆਪਣੇ ਆਪਣੀ ਮੱਤ ਹੈ ਨਾ ਉਹਦੇ ਨਾਲੇ ਉਹਦਾ ਨਾਸ ਹੁੰਦਾ। ਬਚਨ ਗੁਰੂ ਦੇ ਬਚਨਾ ਦਾ ਨਾਸ ਤਾਂ ਕਾਲ ਦਾ ਨਾਸ ਹੁੰਦਾ ਹੈ ਪਰਮ ਦਾ ਨਾਸ ਹੁੰਦਾ ਹੈ ਕਹਿ ਲਓ ਕੁਰਬਾਨੀ ਦਾ ਤਾਂ ਪਰਮ ਦਾ ਨਾਸ ਹੋਊਗਾ ਜੇ ਬੁਨਬਤ ਦੇ ਬਚਨ ਨੇ ਉਹਦੇ ਨਾਲ ਆਪਣੀ ਆਪਣੀ ਅਕਲ ਦਾ ਗੁੱਦੀ ਦਾ ਨਾਸ ਹੋਊਗਾ ਹਾਂਜੀ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਹੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਨ ਹੈ ਐ ਤੇ ਪੰਡਤ ਨੇ ਜਿਹੜੇ ਮੂਰਖ ਨੇ ਮੂਰਖ ਪੰਡਤਾਂ ਨੂੰ ਪੰਡਤਾਂ ਮੂਰਖਾਂ ਦੇ ਨਾਲ ਲੱਗਿਆ ਐ ਇਹ ਪੰਡਤ ਵਿਦਵਾਨ ਮੂਰਖ ਨੇ ਮਾਸ ਮਾਸ ਕਰ ਮੂਰਖਾਂ ਦੇ ਮੂਰਖ ਮਾਸ ਮਾਸ ਕਰਕੇ ਝਗੜੀ ਜਾਂਦੇ ਨੇ ਇਹ ਝਗੜਦੇ ਨੇ ਜਿਹਦੇ ਨਾਲ ਬਾਣਾ ਜਿਹਨਾਂ ਨੇ ਬੁਝ ਲਿਆ ਗੁਰਮੁਖਾਂ ਨਾਲ ਝਗੜਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਕਿਉਂ ਝਗੜੇ ਗਿਆਨ ਔਰ ਧਿਆਨ ਦੋ ਜਾਣ ਨਹੀਂ ਜਾਣਾ ਇਹ ਨਹੀਂ ਜਾਣਦੇ ਕਿ ਗਿਆਨ ਦੇ ਬਿਨਾ ਧਿਆਨ ਨਹੀਂ ਜੁੜ ਸਕਦਾ ਆਪਣੇ ਆਪ ਇਹ ਧਿਆਨ ਲਾਉਂਦੇ ਨੇ ਅਗਿਆਨਤਾ ਨਾਲ ਅਗਿਆਨਤਾ ਨਾਲ ਧਿਆਨ ਸੁਭਾਤੀ ਲਾਉਂਦੇ ਨੇ ਨਹੀਂ ਹੋ ਸਕਦਾ ਜੀ ਜਿਹੜੀ ਚੀਜ਼ ਦਾ ਗਿਆਨ ਨਹੀਂ ਹੈ ਧਿਆਨ ਨਹੀਂ ਆ ਸਕਦੀ ਧਿਆਨ ਧਰਨ ਵਾਸਤੇ ਉਹਦਾ ਗਿਆਨ ਲੈਣਾ ਪਹਿਲਾਂ ਜ਼ਰੂਰੀ ਹੈ ਪਹਿਲਾਂ ਗਿਆਨ ਲੈਣਾ ਚਾਹੀਦਾ ਤਾਂ ਗਿਆਨ ਦਾ ਪਤਾ ਬਣ ਰਹੇ ਹੂਗਾ ਕਿ ਹਾਂ ਉਹ ਆਉਗੀ ਚੀਜ਼ ਜੀ ਦਾ ਸਾਨੂੰ ਗਿਆਨ ਹੋਊ ਕਿਆ ਨਹੀਂ ਧਿਆਨ ਵੱਲ ਨੂੰ ਲੈ ਕੇ ਜਾਂਦਾ ਹੈ ਧਿਆਨ ਗਿਆਨ ਨਾਲੇ ਟਿਕਦਾ ਹੈ ਗਿਆਨ ਧਿਆਨ ਨਹੀਂ ਜਾਣੇ ਇਹਨਾਂ ਨੂੰ ਗਿਆਨ ਧਿਆਨ ਵਾਲੀ ਥਿਊਰੀ ਦਾ ਨਹੀਂ ਪਤਾ ਤੇ ਕੀ ਕਰਦੇ ਨੇ ਧਿਆਨ ਪਹਿਲਾਂ ਲਾਉਂਦੇ ਨੇ ਗਿਆਨ ਆਪੇ ਹੋ ਇਹ ਧਿਆਨ ਗਿਆਨ ਨੂੰ ਵਿਸ਼ਵਾਸ ਕਰਦੇ ਗਿਆਨ ਧਿਆਨ 'ਚ ਵਿਸ਼ਵਾਸ ਵੀ ਕਰਦੇ ਇਹ ਨਹੀਂ ਜਾਣਦੇ ਗਿਆਨ ਧਿਆਨ ਨਾਲ کامیابی ਆ ਧਿਆਨ ਤੋਂ ਬਾਅਦ ਗਿਆਨ ਹੋ ਇਹ ਗੱਲ ਗਲਤ ਹੈ ਹਾ ਧਿਆਨ ਜਦੋਂ ਕੋਈ ਉਪਦੇਸ਼ ਕਰੇ ਉਹਦੇ ਧਿਆਨ ਨਾਲ ਸੁਣੇ ਉੱਥੋਂ ਤਾਂ ਹੋ ਸਕਦਾ ਹੈ ਗਿਆਨ ਪਰ ਜੇ ਉਹੀ ਚੁੱਪ ਕਰਕੇ ਧਿਆਨ ਲਾ ਕੇ ਬੈਠੇ ਫਿਰ ਨਹੀਂ ਹੋ ਸਕਦਾ ਨਹੀਂ ਜਾਣੇ ਕੌਣ ਬਾਸ ਅਥਵਾ ਆ ਖੜਾ ਕੀਤਾ ਹੈ ਸਵਾਲ ਇਹ ਸਵਾਲ ਦਾ ਜਵਾਬ ਅੱਜ ਫਿਰ ਨਹੀਂ ਦਿੱਤਾ ਫਾਸਤੇ ਫਿਰ ਇੱਥੇ ਕੌਣ ਇਹ ਮੂਰਖ ਨੇ ਸਾਰੇ ਜਿਹੜੇ ਬਾਸ ਦੀ ਗੱਲ ਕਰਦੇ ਨੇ ਮੂਰਖ ਦੇ ਮਾਸ ਬਾਸ ਤੇ ਝਗੜਾ ਕਰਦੇ ਨੇ ਨਹੀਂ ਖਾਣਾ ਚਾਹੀਦਾ ਖਾਣਾ ਚਾਹੀਦਾ ਝਗੜਾ ਉਹ ਮੂਰਖ ਮਾਸ ਮਾਸ ਕੀ ਚੀਜ਼ ਹੈ ਭਾਈ ਤਾਣ ਸਾਗ ਸਾਗ ਸਾਗਰਾਸਾਸ ਕੀ ਫਰਕ ਹੈ ਜਿਹੜੀ ਜੀਵਾਤਮਾ ਉਹਦਾ ਜਿਹੜਾ ਸਰੀਰ ਹੈ ਜਿਹੜੇ ਵੀ ਦੇਹ ਹੈ ਉਹ ਬਾਸ ਹੈ ਅਸੀਂ ਕਿਸੇ ਨੂੰ ਸਾਗ ਕਹਦੇ ਨੇ ਸਬਜ਼ੀ ਕਹਿੰਦੇ ਨੇ ਕਿਸੇ ਨੂੰ ਮਾਸ ਕਹਿੰਦੇ ਆਲੂ ਵੀ ਬਾਸ ਹੈ ਆਂਡਾ ਵੀ ਬਾਸ ਹੈ ਇਸ ਰਾਣ ਨੇ ਅੱਜ ਨਾਲ ਆਲੂ ਨੂੰ ਆਂਡੇ ਹੀ ਕਹਿੰਦੇ ਨੇ ਇਹਨਾਂ ਨੂੰ ਖਾਣ ਦਾ ਆਂਡੇ ਕਹਿੰਦੇ ਨੇ ਵੀ ਆਲੂ ਤਾਂ ਖਾਂਦੇ ਹੀ ਨੇ ਆਂਡੇ ਖਾਂਦੇ ਹੋ ਬਸ ਪਰੰਡ ਸਮਾਣੇ ਕਿਹੜੀ ਚੀਜ਼ ਦੇ ਵਿੱਚ ਪਾਪ ਹੈ ਕਿੱਥੇ ਪਾਪ ਸਮਾਏ ਹੋਏ ਨੇ ਸਾਖ ਖਾਂਜੇ ਪਾਪ ਨਹੀਂ ਆਪਾ ਸਾਖਾਂ ਦੇ ਪਾਪ ਨੇ ਜਿੱਤੇ ਰਾਣੇ ਅੰਨ ਕੇ ਜੀਵਾਜ ਨਾ ਕੋਏ ਜੇ ਸਾਖ ਆਪ ਸਤਿਗੁਰਾਂ ਨੇ ਸਾਰਿਆਂ ਦੇ ਜੀਅ ਉਹ ਸਾਰੇ ਹੀ ਬਾਸ ਐ ਜੋਸੀਂ ਖਾਂਦੇ ਨਿਕਲ ਜਾਂਦਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਨਸ ਖਾਣੀ ਤਾਂ ਦੇਵਤਿਆਂ ਨੂੰ ਜੇ ਦੇਵਤਿਆਂ ਦੀਆਂ ਗੱਲਾਂ ਉਹਨਾਂ ਦੇ ਗ੍ਰੰਥ ਪੜ੍ਹੀਏ ਉਹ ਤਾਂ ਘੈਂਡਾ ਮਾਰ ਕੇ ਹੋਮ ਕਰਦੇ ਰਹੇ ਤੇ ਜੱਗ ਕਰਦੇ ਰਹੇ ਨੇ ਪਹਿਲਾਂ ਹਾਥੀ ਕਰਦੇ ਸਨ ਅਸਲ 'ਚ ਹਾਥੀ ਦੀ ਜਗ੍ਹਾ ਫਿਰ ਉਹ ਰਾਜੇ ਨੇ ਹਟਾ ਦਿੱਤੇ ਵੀ ਭਾਈ ਹਾਥੀ ਇੰਦੇ ਨਹੀਂ ਹੈਗੇ ਹਾਥੀਆਂ ਦੀ ਸਾਨੂੰ ਲੋੜ ਹੈ ਜੰਗ ਵਾਸਤੇ ਵੀ ਲੋੜ ਹੈ ਕੰਮ ਵਾਸਤੇ ਵੀ ਲੋੜ ਹੈ ਇਹ ਨਾ ਕਰਿਆ ਕਰੋ ਉਹਨਾਂ ਨੇ ਉਹਦੇ ਤੋਂ ਘੈਂਡਾ ਕਰ ਲਿਆ ਸੀ ਫਿਰ ਉਹ ਗੋਵੇ ਦੇ ਅੱਗੇ ਔਰ ਕਜਬੇ ਦੇ ਅੱਗੇ ਕਜਬੇ ਦੇ ਅੱਗੇ ਕਜਬੇ ਦਾ ਮਤਲਬ ਹੈ ਹਾਥੀ ਕਾਇਦੇ ਦੀ ਜਗ੍ਹਾ ਘੈਂਡਾ ਕਰ ਲਿਆ ਸੀ ਘੈਂਡਾ ਮਾਰ ਮਾਰ ਕੇ ਹੋਮ ਜੱਗ ਕੀਏ ਉਹ ਕਰਦੇ ਸੀ ਯੱਗ ਕਰਦੇ ਸੀ ਅੱਗ ਦਾ ਮਤਲਬ ਉਹਦਾ ਮਾਸ ਖਾਦੇ ਸੀ ਦੇਵਤਿਆਂ ਦੀ ਬਾਣੇ ਦੇਵਤਿਆਂ ਤੋਂ ਆਦਤ ਸੀ ਉਹ ਤਾਂ ਕਰਦੇ ਹੀ ਸੀ ਹੁਣ ਬਾਤ ਛੋੜ ਪੈਸੇ ਨੱਕ ਪਕੜਾ ਉਹ ਦੇਵਤਿਆਂ ਨੂੰ ਮੰਨਦੇ ਨੇ ਦੇਵਤਿਆਂ ਦੀ ਪੂਜਾ ਕਰਦੇ ਨੇ ਬਾਸ ਦੇ ਕੇ ਨੱਵੜ ਲੈਂਦੇ ਨੇ ਮਗਲਾ ਰਾਤੀ ਮਹਨਸਗਾਂ ਨੇ ਉਹ ਆਦਮੀ ਸਬੂਤੇ ਖਾ ਜਾਂਦੇ ਸਬੂਤੇ ਖਾ ਜਾਂਦੇ ਨੇ ਮਾਨਸ ਦਾ ਮਤਲਬ ਆਸਦੀ ਆਦਮੀ ਖਾਣ ਦੇ ਆਦਮ ਖਾਣੇ ਦੇ ਆਦਮ ਖੋਰ ਨੇ ਆਦਮ ਖੋਰ ਕਹਿੰਦੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਗਿਆਨ ਫਾਇਦੀ ਲੱਗੀ ਜਾਤ ਪਹਾਏ ਨੂੰ ਉਹ ਹੋਰ ਵੀ ਸੀਗੇ ਜਿਵੇਂ ਉਹ ਸੱਜਣ ਪਰਗੇ ਸੀਗੇ ਪੈਸੇ ਨਾਲ ਆਦਮੀ ਵਾਰ ਦੇਣਾ ਆਦਮੀ ਨੂੰ ਕਹਿਣਾ ਵੀ ਤੂੰ ਸਭ ਕੁਝ দান ਕਰ ਇੱਥੇ ਛਾਲ ਮਾਰ ਖੂਹ ਦੇ ਵਿੱਚ ਤੈਨੂੰ ਮੁਕਤੀ ਹੋ ਬਨਾਰਸ ਵਿੱਚ ਕਿ ਮਾਨਸ ਖਾਣ ਨਹੀਂ ਪੈਸੇ ਵਾਸਤੇ ਆਜਿ ਮਾਰਦੇ ਨੇ ਹੁਣ ਸਾਨੂੰ ਨਹੀਂ ਰਹੇ ਇਹ ਭੁਗਤੀ ਦਾ теаਟ੍ਰ ਹੀ ਤੈਨਾਂ ਹਾਂ ਅੱਛਾ ਜੀ ਇੱਕ ਕਰਵੱਤ ਵੀ ਸੀਗਾ ਉੱਥੇ ਉਹਦੇ ਨਾਲ ਵੀ ਵੱਢਦੇ ਸੀ ਜੀ ਕੋਈ ਕਰਵਾ ਅੱਛਾ ਜੀ ਜੇ ਜੇਲੇ ਡੇਰੇ ਦੀ ਸੰਤਾਲੇ ਉੱਥੇ ਚਲੇ ਜਾਂਦੇ ਸੀ ਹੁਣ ਵੀ ਹੈਗੇ ਕਈ ਡੇਰੇ ਆਹੇ ਅਮੀਰ ਆਦਮੀ ਉਹਨਾਂ ਨਾਲ ਵੀ ਤੁਸੀਂ ਸਾਰਾ ਉਹ ਲੈ ਕੇ ਸਭ ਕੁਝ ਆ ਜਾਂਦੇ ਨੇ ਉਹਤੇ ਆਪਣਾ ਜੋ ਵੀ ਜੇਵਰਾਤ ਉਹਨਾਂ ਕੋਲ ਪੈਸਾ ਹੁੰਦਾ ਉਹ ਫਿਰ ਆਦਮੀਆਂ ਉਹਨਾਂ ਲੋਕਾਂ ਨੂੰ ਮਾਰ ਕੇ ਕਿਤੇ ਇੰਦਰੂ ਤੇ ਕਰ ਦਿੰਦੇ ਸੀ ਲੋ ਇਹ ਢੇਰਿਆਂ ਵਾਲੇ ਜਿਹੜੇ ਸੀਗੇ ਸਭ ਆਪਣੇ ਆਪ ਨੂੰ ਕਹਿੰਦੇ ਇਹ ਵਿਸ਼ਵਾਸ ਚ ਲੈ ਲੈਂਦੇ ਸੀ ਉਹਨਾਂ ਆਦਮੀਆਂ ਨੂੰ ਵਿਸ਼ਵਾਸ ਹੋਏ ਜਾਂਦਾ ਸੀ ਬੜਾ ਜ਼ੰਮਾ ਪ੍ਰਚਾਰ ਕਰਦੇ ਸੀ ਵਧੀਆ ਉਹ ਵਿਚਾਰੇ ਪੋਹੇ ਪਾੜੇ ਲੋਕ ਸਾਡੀ ਟੁੱਟ ਖੋੜੀ ਚਾਹਤੇ ਇਹਨਾਂ ਕੋ ਆ ਜਾਂਦੇ ਸੀ ਕਈਆਂ ਦੇ ਔਲਾਦ ਨਹੀਂ ਹੁੰਦੀ ਉਹ ਆ ਜਾਂਦੇ ਸੀ ਇਹ ਇਦਾਂ ਕਰਦੇ ਸੀ ਉਹਨਾਂ ਅੱਛਾ ਜੀ ਫੜ ਕਰ ਲੋਕਾਂ ਨੂੰ ਦਿਖਲਾਵਾਂ ਗਿਆਨ ਧਿਆਨ ਨਹੀਂ ਸੁੱਝੈ ਨਾਨਕ ਅੰਧੇ ਸਿਉਂ ਕਿਆ ਕਹੀਐ ਕਹੈ ਨਾ ਕਹੈ ਆ ਬੁੱਝੈ ਫੜ ਮਾਰਦੇ ਨੇ ਫੜ ਮਾਰਦੇ ਨੇ ਫੜ ਕਰ ਲੋਕ ਕਾਂਕੂ ਦਿਖਲਾਵਾਂ ਫੜ ਮਾਰਦੇ ਨੇ ਅਸੀਂ ਬਾਸਲੀ ਖਾਂਦੇ ਅਸੀਂ ਉਹਦੀ ਕਰਦੇ ਜੀ ਮਾਸ ਖਾਣ ਵਾਲਾ ਆਦਮੀ ਤਾਂ ਦਿਆਵਾਨ ਹੋਈ ਨਹੀਂ ਸਕਦਾ ਉਹ ਗੁਰਬਾਣੀ ਤੁਹਾਨੂੰ ਕਹਿੰਦੀ ਆ ਸਭ ਨੇ ਦਿਆਲੀ ਤੁਹਾਡੇ ਚ ਤੁਸੀਂ ਕਹਿੰਦੇ ਹੋ ਦਿਆ ਲੋਕਾਂ ਨੂੰ ਦਿਆ ਬਾਣ ਹੋਰ ਬਹੁਤ ਨੇ ਜਿਹੜੇ ਬਾਣ ਖਾਂਦੇ ਨੇ ਉਹ ਦਿਆ ਬਾਣ ਨੇ ਸੰਸਾਰ 'ਚ ਬਹੁਤ ਜ਼ਿਆਦਾ ਪਰ ਤੁਸੀਂ ਤਾਂ ਕੱਲ੍ਹ ਤੋਂ ਸਿੱਖਾ ਕੇ ਪਾਤਾ ਨਾਮ ਲਵੇ ਇੱਕ ਬਹੁਤ ਬੜੀ ਘਾੜਾਦਰੀ ਕਰਤੀ ਵੀ ਹੈ ਨਾਮੇ ਦੀ ਲੈਣ ਲੈਣਾ ਰੱਬ ਨਾਲ ਜੋੜੇ ਦੀ ਦੇਣ ਧਾਰਮਿਕ ਬੰਦੇ ਹੋਣੇ ਨਹੀਂ ਦੇਣਾ ਇਹਨੂੰ ਤਰਮ ਪੜ੍ਹਨੇ ਦੀ ਦੇਣ ਇਹ ਪਾਪੀ ਆਦਮੀ ਅਪਰਾਧੀ ਸੀ ਕੋ ਉਹ ਬਰਾਦੀ ਨੇ ਜਿਹੜਾ ਗੋਣ ਖਾਂਦੇ ਨੇ ਵਨਾਂ ਦਾ ਇਹ ਜਾ ਕੰਮ ਕੀਤਾ ਸਾਈਓ ਲੜੀ ਕੀਤਾ ਮੁਸਲਮਾਨ ਨੇ ਇਹ ਜਾ ਕੰਮ ਕੀਤਾ ਪਰ ਇਹਨਾਂ ਨੇ ਕੀਤਾ ਉਹ ਕਹਿ ਰਹੇ ਦੇ ਫੜਾ ਮਾਰ ਕੇ ਦਿਖਾਉਂਦੇ ਨੇ ਲੋਕਾਂ ਨੂੰ ਗਿਆਨ ਧਿਆਨ ਗਿਆਨ ਤੋਂ ਬਿਨਾ ਧਿਆਨ ਗਿਆਨ ਨਾਲ ਹੀ ਧਿਆਨ ਜੁੜੂਗਾ ਇਹ ਗੱਲ ਨੂੰ ਕੁਝ ਇਹਨਾਂ ਨੂੰ ਸਮਝ ਨਹੀਂ ਜਦੀ ਸੁਝਦੀ ਨਹੀਂ ਇਹਨਾਂ ਨੂੰ ਇਹਦੀ ਸਮਝ ਨਹੀਂ ਲੈ ਰਹੇ ਗਿਆਨ ਤੋਂ ਬਿਨਾ ਜੀਤੇ ਚੀਜ਼ ਤਾਂ ਸਾਨੂੰ ਗਿਆਨ ਦੀ ਉਹਦੇ ਨਾਲ ਧਿਆਨ ਕਰਨ ਜੋੜ ਲਵਾਂਗੇ ਤੇ ਦੇਖਿਆ ਹੀ ਨਹੀਂ ਆਦਮੀ ਨੂੰ ਤੁਹਾਡੇ ਜ਼ਿਹਨ 'ਚ ਕਦੇ ਆ ਜਾਊਗਾ ਨਾਨਕ ਅੰਦੇਸਾਂ ਕਹਈਏ ਨਾਨਕ ਕਹਿੰਦੇ ਇਹਨਾਂ ਨੂੰ ਦੱਸੋ ਬੁੱਧੀ ਹੀਦ ਇਹਨਾਂ ਨੂੰ ਬੁੱਧੀ ਹੀਦ ਕੀ ਕਹੀਏ ਤਾਹ ਮੈਂ ਕਹਿਆ ਉਹ ਜਾ ਦੱਸ ਸਕਦਾ ਕੁਝ ਕਿਉਂ ਦੇਣਾ ਤਾਂ ਉਹ ਨੂੰ ਲਈ ਦੀ ਜਾਂ ਤਾਂ ਰਾਹ ਦੱਸ ਸਕਦਾ ਨਾ ਜੇ ਉਹ ਦੱਸੇ ਨਾ ਉਹ ਬੁੱਝ ਸਕਦਾ ਗੁਰੂ ਘੜਾ ਦੇਹਨ ਦਾ ਜਾਨੂੰ ਇੱਧਰੋਂ ਚਲਾ ਜਾ ਫਿਰ ਐਂ ਚ ਲੈ ਜਾਇ ਫਿਰ ਐ ਉਹ ਉਹ ਨੂੰ ਦੇਖਾਂ ਦਾ ਹੈ ਨਹੀਂ ਕੁਝ ਤੇ ਸਮਝ ਲੈ ਅੱਗੇ ਅੰਧੇ ਕਿਹਨੂੰ ਕਹਿੰਦੇ ਹਾਂ ਸੋਏ ਜੇ ਅੰਧ ਕਮਾਵੇ ਤਿਸ ਹਿਰਦੇ ਸੇ ਲੋਚਨ ਨਹੀਂ ਮਾਤ ਪਿਤਾ ਕੀ ਰક્ત ਨਿਪਨਨੇ ਮੱਛੀ ਮਾਸ ਨਾ ਖਾਹੀ ਇਹਨਾਂ ਦਾ ਮਤਲਬ ਉਹ ਕਹਿੰਦਾ ਇਥੇ ਜਿਹੜਾ ਬਹਾਲੀਆਂ ਅੱਖਾਂ ਵੀ ਜਿਹਦੇ ਹਣ ਉਹਦਾ ਵਿਚਾਰਿਆਂ ਨੂੰ ਕੋਦਾ ਸਾਨੂੰ ਨਹੀਂ ਦਿੱਤੀਆਂ ਅੱਖਾਂ ਉਹ ਗੜ ਖਾਂਦਾ ਸੀ ਅੰਨੇ ਤਾ ਉਹ ਰੇਗੜੇ ਹੰਦ ਦੀ ਕਮਾਈ ਕਰਦੇ ਤੇ ਮਾਲਾ ਫੇਰੀ ਜਾਂਦੇ ਨੇ ਗਿਆਨ ਨੇ ਗਿਆਨ ਲੈਂਦੇ ਨਹੀਂ ਮਾਲਾ ਫੇਰਦੇ ਨੇ ਗਿਆਨ ਤਾਂ ਦਿੱਤਾ ਹੋਇਆ ਬੜੀ ਲੱਗਦਾ ਸਮਾਧੀ ਲਾਈ ਜਾਂਦੇ ਨੇ ਗਿਆਨ ਨਹੀਂ ਦਿੱਤੀ ਉਹ ਗੁਰਨਾਥ ਦੇਵ ਜੀ ਗਏ ਨੇ ਸਾਰਿਆਂ ਕੋਲ ਮੌਲਾਲਿਆਂ ਕੋ ਵੀ ਗਏ ਨੇ ਸਮਾਧੀ ਵਾਲਿਆਂ ਕੋਲ ਵੀ ਗਏ ਨੇ ਲੈ ਆਨੀਆਂ ਉਹਨਾਂ ਦੇ ਗਿਆਨ ਸਸਣ ਮੱਥਾ ਮਾਈ ਕਰੀ ਜਾਂਦੀ ਸੀ ਅੱਲਾ ਸੋਈ ਜੇ ਅੰਧ ਕਮਾਵਾ ਹੈ ਕਮਾਈ ਕਰਦਾ ਹੈ ਜੀ ਕੁਝ ਵੀ ਕਮਾਈ ਨਹੀਂ ਕਰਤੇ ਸਦੇ ਸਦੇ ਸਲੋਚ ਅੰਦਰ ਵਾਲੀ ਅੱਖ ਹੈ ਜੀ ਅੱਖ ਨਹੀਂ ਹੈ ਬੁੱਧੀ ਨਹੀਂ ਹੈ ਫਿਰ ਅੱਖ ਬੁੱਧੀ ਹੁੰਦੀ ਹੈ ਬੁੱਧੀ ਨਹੀਂ ਆ ਕਬੁੱਧ ਫੜੀ ਹੋਈ ਹੈ ਉਹਨਾਂ ਨੇ ਕਬੁੱਧ ਫੜੀ ਹੋਈ ਹੈ ਉਹਦੇ ਨਹੀਂ ਹੈ ਉਹ ਬਾਤ ਕਬੁੱਧ ਦੇ ਆਪਣੇ ਨੁਕਸਾਨ ਕਰ ਲੈਣੇ ਦੁਆ ਦਾ ਕੀ ਕਰ ਲੈਣੇ ਮਾਤਾ ਪਿਤਾ ਕੀ ਰੱਖਤ ਦੇ ਆਪੇ ਉਹ ਦੇ ਖੂਨ ਨਾਲ ਤਾਂ ਉਹਨਾਂ ਦੀ ਆਪਣੀ ਸਰੀਰ ਬਣੀ ਬੱਚੀ ਬਾਸ ਕਾ ਤੇ ਲੇਖਣ ਦੀ ਕਹੀਦਾ ਬੱਚੀ ਬਾਸ ਨਾ ਖਾਹੀ ਇਹ ਉਪਦੇਸ਼ ਕਰਦਾ ਬੱਚੀ ਬਾਸ ਨਾ ਖਾਓ ਉਹ ਸਰੀਰ ਬਣਿਆ ਕਾਦਾ ਹੋਇਆ ਤੁਹਾਡਾ ਇਹ ਸਰੀਰ ਨੇ ਖਾਣਾ ਤੂੰ ਤੁਸੀਂ ਖਾਣ ਮੈਂ ਖਾਣਾ ਸਰੀਰ ਨੇ ਖਾਣਾ ਇਹਦੀ ਸਮਝ ਨਹੀਂ ਆਉਂਦੀ ਤੇਰਾ ਭੋਜਨ ਕੁਝ ਹੋਰ ਹੈ ਸਰੀਰ ਦਾ ਭੋਜਨ ਕੁਝ ਹੋਰ ਹੈ ਸਰੀਰ ਦਾ ਤਾਂ ਬਾਸ ਦਾ ਬਾਸ ਜੋ ਕੁਛ ਖਾਇਆ ਪਿਛਲੀ ਪੰਗਤੀ ਚ ਆ ਗਿਆ ਮਾਸੋਂ ਹੀ ਮਾਸ ਉਪਜਿਆ ਤੇ ਮਾਸ ਤੋਂ ਮਾਸ ਉਪਜੂ ਕਿਵੇਂ ਧਰਤੀ ਚ ਬੀਜਿਆ ਤਾਂ ਮਾਸ ਉਪਜਦਾ ਨਹੀਂ ਹੈ ਇਹ ਉਪਜਦਾ ਫਿਰ ਉਹ ਮਾਸ ਹੀ ਹੈ ਜੋ ਉਪਜਿਆ ਧਰਤੀ ਚ ਜੋ ਬੀਜਿਆ ਉਹ ਵੀ ਮਾਸ ਉਪਜਿਆ ਉਹ ਬੀਜਿਆ ਵੀ ਮਾਸ ਹੀ ਸੀ ਦਾਣਾ ਅੰਦਰ ਬੀਜਿਆ ਸੀ ਉਹ ਵੀ ਮਾਸ ਬੀਜਿਆ ਸੀ ਆਤਮਾ ਤਾਂ ਜ਼ਰੂਰ ਸੀ ਵਿੱਚ ਉਹਦੇ ਪਰ ਦਾਣਾ ਜਿਹੜਾ ਉਹਦਾ ਸਾਈਜ਼ ਦਾ ਦਾਣੇ ਦਾ ਜੋ ਦੀਦਾ ਸਾਡੂ ਜਿਹੜਾ ਆਟਾ ਬਣਦਾ ਉਹ ਤਾਂ ਮਾਸ ਹੈ ਉਹ ਤੋਂ ਦਾਣੀ ਪੈਦਾ ਹੋਇਆ ਨਹੀਂ ਮਾਸੇ ਪੈਦਾ ਹੋਇਆ ਨਾ ਆਤਮਾ ਦਾ ਦੀਦੀ ਨਹੀਂ ਹੈ ਜੋ ਅਸੀਂ ਖਾਧਾ ਹੈ ਜੋ ਵੀ ਕੁਝ ਖਾਧਾ ਹੈ ਅਸ ਦਾ ਮਾਸ ਉਸ ਤੋਂ ਹੀ ਬਣਿਆ ਜਿਨ੍ਹਾਂ ਨੇ ਮਾਸ ਖਾਧਾ ਉਹਨਾਂ ਦਾ ਵੀ ਸਰੀਰ ਬਣਦਾ ਜਿਨ੍ਹਾਂ ਨੇ ਮਾਸ ਨਹੀਂ ਖਾਧਾ ਦੁੱਧ ਪੀਤਾ ਹੋਰ ਕੁਝ ਵੀ ਖਾਧਾ ਮਾਸ ਬਣਿਆ ਬਾਸੋ ਹੀ ਬਾਸ ਉੱਪਜਾਇਆ ਇਫੈਕਟ ਹੈ ਵਾਸ ਵਜੇ ਬੱਚੇ ਦਾ ਮਾਸ ਤੋਂ ਥੋੜਾ ਜਿਹਾ ਹੁੰਦਾ ਉਹ ਵੀ ਮਾਸ ਤੋਂ ਪੈਦਾ ਹੋਇਆ ਜੋ ਬਣਿਆ ਹੈ ਮਾਸ ਬੱਚੇ ਤੋਂ بڑا ਹੋਏਗਾ ਉਹ ਕਿੱਥੋਂ ਪੈਦਾ ਹੋਇਆ ਫਿਰ ਵਾਸੇ ਖਦਦ ਹੈ ਤਾਂ ਮਾਸ ਉਪਜੇ ਹੈ ਇਹ ਦਲੀਲ ਬੜੀ ਸੌਂਡ ਦਲੀਲ ਹੈ ਬੜੀ ਤਕੜੀ ਦਲੀਲ ਹੈ ਇਹਦਾ ਜਵਾਬ ਨਹੀਂ ਦਿੰਦਾ ਕੋਈ ਪ੍ਰਚਾਰ ਹੋਈ ਕਰੀ ਜਾਂਦੇ ਨੇ ਬੈਸੂ ਭਗਤ ਵਾਲੇ ਨੇ ਜਿਹੜੇ ਨਾ ਬੈਸੂ ਭਗਤੀ ਵਾਲੇ ਨੇ ਹਮਾਲਾ ਵਾਲੇ 108 ਲਿਖਦੇ ਨੇ ਇਹ ਬੈਸੂ ਭਗਤੀ ਐਸੇ ਨੇ ਇਹ ਈਨਾ ਦੇ ਧਰਮ ਦੇ ਵਿੱਚ ਮਾਸ ਦੀ ਨਹੀਂ ਖਾਣਾ ਗੁਰੂ ਅਰਦਾਸ ਵੀ ਉਸੇ ਬਤ ਜੋ ਆਏ ਹੋਏ ਉਹ ਦੇ ਉਸੇ ਤਰ੍ਹਾਂ ਬਦਲ ਤੇ ਗੁਰਬੁਲ ਦੀਦਸ ਕਿ ਪਾਸ਼ਾ ਦੇ ਬੈਸੂ ਉਸ ਜੇ ਸੁਪਰ ਸੁਪਰ ਮਾਇਆ ਤੋਂ ਹੈ ਤੇ ਬੈਸੂ ਤਾਂ ਸੰਤੋਖੀ ਆ ਜਿਹਦੇ ਅੰਦਰ ਮਾਇਆ ਦੀ ਭੁੱਖ ਨਹੀਂ ਆ ਉਹ ਹੈ ਬੈਸੂ ਹਾਂਜੀ ਮਾਤ ਪਿਤਾ ਕੀ ਰਕਤ ਨਿਪਨ ਨਹੀਂ ਲੱਗੀ ਭਾਵੇਂ ਜੀ ਆ ਪਿਤਾ ਦੀ ਰਕਤ ਤੋਂ ਤਾਂ ਥੋੜਾ ਸ਼ਰੀਰ ਬਣੇ ਇਹ ਜੜਦੀ ਉਹ ਗੱਲ ਹੋ ਰਹੀ ਹੈ ਹਾਂ ਹਾਂ ਜਿਹੜਾ ਬਾਹਰਲਾ ਸ਼ਰੀਰ ਹੈ ਠੀਕ ਹੈ ਉਹ ਜ਼ਿਹ ਨਮਾਜ਼ ਖਾਣ ਉਹ ਦੀ ਖਰਾਕ ਹੈ ਬਾਸ ਆਤਮਾ ਦੀ ਖਰਾਕ ਤੇ ਨਮਾਜ਼ ਆਤਮਾ ਦੀ ਦਾ ਖਰਾਕ ਗਿਆਨ ਉਹ ਤਾਂ ਲੈਂਦੇ ਦੀ ਹਾਂ ਇਸਤਰੀ ਪੁਰਖੇ ਮੇਲਾ ਉੱਥੇ ਮੰਦ ਕਮਾਹੀ ਮਾਸੂ ਨਿੰਮੇ ਮਾਸੂ ਜੰਮੇ ਮਮਾ ਸੇ ਕੀ ਭਾਂਡੇ ਰਾਤ ਸਮੇਂ ਚ ਉਹਨਾਂ ਦਾ ਵੀ ਲਾਭ ਹੁੰਦਾ ਹੈ ਉਹ ਤੇਰੇ ਕੀ ਫਿਰ ਉੱਥੇ ਬੰਦ ਕਰਮ ਕਰਦੇ ਰਹੋ ਤੁਹਾਡੀ ਨਿਗਾਹ ਜੰਦ ਕਰ ਮਾ ਉਹ ਮਾਸੂਂ ਜੰਬੇ ਮਾਸੂਂ ਜੰਬੇ ਸਭਾ ਸੇ ਕੇ ਭਾਂਡੇ ਹਕੀਕਤ ਹੈ ਮਾਸੂਂ ਜੇ ਅਸੀਂ ਜੰਬਿਆਂ ਮਾਸੂਂ ਜੰਬਿਆਂ ਅਸੀਂ ਮਾਸੇ ਦੇ ਭਾਂਡੇ ਆ ਜੀਰ ਕਰਕੇ ਹਮਾ ਵਾਸੇ ਕੇ ਭਾਂਡੇ ਹਾਂ ਗਿਆਨ ਧਿਆਨ ਕਛ ਸੂਝੈ ਨਾ ਚਤੁਰ ਕਹਾਵੇ ਪੰਡਿ ਗਿਆਨ ਧਿਆਨ ਦਾ ਤਾਂ ਕੋਈ ਸੋਝੀ ਹੈ ਗਿਆਨ ਧਿਆਨ ਤੇ ਗੱਲ ਆਖਦੀ ਬੜੀ ਜਾਂਦੀ ਹੈ ਉਹ ਗਿਆਨ ਤੇ ਬਿਨਾ ਧਿਆਨ ਨਹੀਂ ਆਏ ਦੀ ਤੈਨੂੰ ਕਿਉਂ ਦੀ ਸਮਝ ਨਹੀਂ ਚਤੁਰ ਕਹਾਵੇਂ ਪੜਨੇ ਪੜਾ ਚਤੁਰ ਬਣਦਾ ਬੜੀਆਂ ਗੱਲਾਂ ਕਰਦਾ ਇਲਾਕੀਆਂ ਬੜੀਆਂ ਦਲੀਲਾਂ ਦਿੰਦਾ ਉਲਟੀਆਂ ਸਿੱਧੀਆਂ ਜੇ ਦਲੀਲਾਂ ਉਲਟੀਆਂ ਤਾਂ ਸੁਣ ਲੈ ਗੱਲ और ਕਹਾਣ ਹੁਣ ਦੱਸਣਗੇ ਬਾਹਰ ਕਾ का मास ਸੁਆਮੀ ਕਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਸੇਰਾ ਕਹਨੇ ਤੇ ਬਾਹਰ ਦਾ ਬਗਾਨਾ ਮਾਸ ਹੈ ਆਪਣੇ ਸਰੀਰ ਤੋਂ ਅਲੱਗ ਅਲੱਗ ਸੁਆਮੀ ਉਹ ਤਾਂ ਮੰਦਾ ਹੈ ਚੱਲ ਬੋਲ ਲਈ ਗੱਲ ਤੇਰੀ ਉਹ ਤਾਂ ਆ ਜਿਹੜਾ ਉਹ ਵੰਦਾ ਜੂਹੇ ਇਹ ਬਾਸ ਤੇਰਾ ਆਪਣਾ ਇਹਨੂੰ ਪਵਿੱਤਰ ਮੰਨਦਾ ਏ ਤੂੰ ਤੇ ਉਹਦੇ ਆਲਾ ਕਿਉਂ ਨਹੀਂ ਪਵਿੱਤਰ ਇਹ ਸਰੀਰ ਨੂੰ ਤਾਂ ਤੂੰ ਬਹੁਤ ਗ੍ਰਿਫਤ ਮੰਨਦਾ ਬਹੁਤ ਪਵਿੱਤਰ ਮੰਨਦਾ ਇਹ ਵੀ ਮਾਸ ਹੈ ਪਾਲਾ ਜੀ ਤੇਰਾ ਵੀ ਮਾਸ ਹੈ ਤੇਰਾ ਮਾਸ ਤਾਂ ਬੜਾ ਸ਼੍ਰੇਸ਼ਟ ਹੈ ਤੇਰੇ ਦਾ ਪੈਰ ਵੀ ਧੋ ਕੇ ਪੀ ਲਵੇ ਫਿਰ ਤਾਂ ਉਹਦਾ ਕਲਿਆਣ ਹੋ ਤੂੰ ਇਹ ਜੇ ਮਾਸ ਹੱਥ ਲੱਗ ਜਾ ਫੇਰ ਬਹੁਤ ਪਾਪ ਹੋ ਜਾਊਗਾ ਇਹ ਕੀ ਗੱਲ ਹੈ ਕੀ ਪਖੰਡੇ ਤੈਰ ਚ ਹੈ ਕੀ ਬਲੈਕਮੇਲਿੰਗ ਸ਼ੁਰੂ ਕੀਤੀ ਹੈ ਲੋਕਾਂ ਨਾਲ ਤੇ ਚਤਰ ਕਹੋਦਾ ਨਾ ਬਲੈਕਮੇਲਰ ਹੈ ਹਾਂਜੀ ਜੀ ਜੰਤ ਸਭ ਹੋਏ ਜੀ ਲਿਆ ਵਾਸੇ ਰ ਆ ਜਿਹੜੇ ਜੀ ਦੇ ਜੰਤ ਸਰੀਰ ਨੇ ਜੀ ਆ ਜਿਹਨਾਂ ਦੇ ਵਿੱਚ ਜੰਤ ਨਹੀਂ ਜੰਤ ਦਾ ਸਰੀਰ ਹੈ ਸਮਾਸ਼ਾ ਹੋਏ ਜੀ ਦੇ ਜਿਹੜੇ ਜੰਤ ਨੇ ने ਸਰੀਰ ਇਹ ਮਾਸ ਤੋਂ ਹੀ ਹੋਏ ਨੇ ਸਾਰੇ ਜੀ ਲਿਆ ਬਸੇਰਾ ਜੀ ਇਹ ਇਹਦੇ ਚ ਬਸੇਰਾ ਲਿਆ ਹੋਇਆ ਹੈ ਮਾਸ ਦੇ ਸਰੀਰ ਚ ਜੰਤ ਵਿੱਚ ਜੀ ਦਾ ਬਸੇਰਾ ਹੈ ਤਾਂ ਇਹਨੂੰ ਜੀ ਜੰਤ ਕਹਿਆ ਵਿੱਚ ਅੰਦਰ ਜੀ ਹੈ ਬਾਹਰ ਮਾਸ ਅੰਧ ਗੁਰੂ ਜਨਕੇਰਾ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸਾ ਕੀ ਭਾਂਡੇ ਪਖ ਪਖੇ ਨਾਲ ਖਾਣ ਵਾਲੀ ਚੀਜ਼ ਖਾਂਦੇ ਨੇ ਕੀ ਖਾਂਦੇ ਨੇ ਪਖਾ ਖਾਣ ਵਾਲੀ ਚੀਜ਼ ਤਜੀ ਹੋਈ ਜਿਹੜੀ ਨਹੀਂ ਖਾਣੀ ਚਾਹੀਦੀ ਧਰਮ ਅਨੁਸਾਰ ਉਹ ਖਾਂਦੇ ਨੇ ਖਾਂਦੇ ਕੀ ਨੇ ਜਿਹੜੀ ਨਹੀਂ ਖਾਣੀ ਸੀ ਪਾਣ ਸੁਪਾਰੀ ਖਾਤੇਆਂ ਮੁਖ ਬੀੜੀਆਂ ਲਾਈਆਂ ਹਰ ਆਰ ਕਬੂ ਨਾ ਚੇਕਿਓ ਜਦ ਪਕੜ ਚਲਾਈਆ ਇਹ ਤਾਂ ਛੱਡਦੇ ਸੀ ਪਾਨਸਬਾਰੀ ਦਾ ਖਾਣੇ ਉਹ ਇਹ ਤਾਂ ਨਹੀਂ ਸੀ ਖਾਣੀ ਚੱਕ ਕੇ ਦੇਖੋ ਫੇਰ ਕੀ ਲਿਖਿਆ ਉਹਦੇ ਵਿੱਚ ਜਿਹੜੀ ਸੀ ਖਾਣੀ ਚਾਹੀਦੀ ਹੈ ਜਿਹੜੀ ਨਹੀਂ ਖਾਣੀ ਚਾਹੀਦੀ ਉਹ ਕਹਿੰਦੇ ਛੜਤਾ ਪੱਕ ਪਖਾਂ ਉਹ ਨਾ ਖਾਣੇ ਰੀ ਚੀਂ ਖਾਦੇ ਹੋ ਹਰ ਵਾਰ ਮੂੰਹ ਹੀ ਠੁੱਕੀ ਜਾਂਦੀ ਹੋਰ ਪੱਕ ਖਾਣੇ ਵਾਲੀ ਤਾਂ ਜੱਕੇ ਪਰੇ ਹੋਗੇ ਕੌਣ ਹੈ ਅੰਧ ਗੁਰੂ ਜਿਹੜ ਕੇ ਰਾ ਜਿਨ੍ਹਾਂ ਦਾ ਅਨਾ ਗਿਆ ਜਿਹਨੋਂ ਕੋਨਾ ਗਿਆ ਜਾ ਜਿਹੜਾ ਗੁਰੂ ਬਣਾ ਬੈਠੇ ਨੇ ਤੇ ਉਹਨਾਂ ਦੀ ਭਾਸ਼ਾ ਜੀ ਗੁਰੂ ਉਹ ਉਹਨਾਂ ਨੂੰ ਗੁਰੂ ਆ ਆਗੂ ਤਦ ਆਗੂ ਇਹਨੂੰ ਗੁਰੂ ਮੰਨਦੇ ਹੋ ਉਹ ਗੈਂਦੀ ਆ ਨੂੰ ਗੁਰੂ ਬਣਾ ਬੈਠੇ ਆ ਮਾਸੂ ਨਿੰਮੇ ਮਾਸੂ ਜੰਮੇ ਹਮ ਮਾਸਾ ਕੀ ਭਾਂਡੇ ਆ ਮਾਸੂ ਨਿੰਮੇ ਮਾਸੂ ਜੰਮੇ ਅਸੀਂ ਮਾਸਾ ਬਾਅਦੇ ਭਾਂਡੇ ਆ ਮਾਸਾ ਕੀ ਭਾਂਡੇ ਗਿਆਨ ਧਿਆਨ ਕਾ ਜਿਸੂ ਜੈਨ ਰੋਹੀ ਕਿਦਰ ਕਹਾਵੇਂ ਪਾਂਡੇ ਉਹ ਗਿਆਨ ਤੇ ਅੰਦੀ ਸੋਝੀ ਕੋਈ ਨਹੀਂ ਕਿਹਤੇ ਬਣਿਆ ਫਿਰਦਾ ਐਵੇਂ ਪਾਂਡੇ ਨੂੰ ਕਿਹਾ ਫੇਰ ਦਵਾਰਾ ਜੋ ਜੀ मास ਪੁਰਾਣੀ ਮਾਸ ਕਤੇਵੀਂ ਚੌਹ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉੱਥੇ ਮਾਸ ਸਮਾਣਾ ਕਹਿੰਦੇ ਤੁਹਾਡੇ ਜਿਹੜੀਆਂ ਗ੍ਰੰਥਾਂ ਦੇ ਗਜਮੇ ਦੇ ਅੱਗ ਇਹ ਫਿਰ ਕਾਹਦੇ ਲਿਖੇ ਨੇ ਬਈ ਬਾਸ ਕਿਤੇ ਵੀ ਉਹਨਾਂ ਦੀ ਮੁਸਲਮਾਨਾਂ ਦੀ ਕਿਤਾਬ ਦੇ ਵਿੱਚ ਵੀ ਬਾਸ ਹੈ ਕੁਰਬਾਨੀ ਦਿੰਦੇ ਨੇ ਕੁਰਬਾਨੀ ਦੇਣ ਉਹਨਾਂ ਦਾ ਵਿਧਾਨ ਸਿੱਧੂਆਂ ਦੇ ਵੀ ਕੁਰਬਾਨੀ ਦੇਣ ਦਾ ਵਿਧਾਨ ਨੇ ਇਹਨਾਂ ਦੇ ਦੇਵਤਿਆਂ ਨੂੰ ਕੁਰਬਾਨੀਆਂ ਦਿੱਤੀ ਜਾਂਦੀਆਂ ਨੇ ਚਾਹ ਜੁਗੀਆਂ ਬਾਸ ਕਮਾਣਾ ਹਰ ਮਾਰਦੀ ਹੋਈ ਕਮਾਈ ਕੀਤੀ ਹੈ ਇੱਥੇ ਆ ਕੇ ਇਹਨਾਂ ਨੇ ਅਚਰੀਰ ਮਾਰਦਾ ਹੀ ਹੈ ਜੋ ਮਾਇਆ ਦੀ ਕਮਾਈ ਹੈ ਮਾਰਦੀ ਹੋਈ ਹੈ ਤੇ कमाई ਕਮਾਈਆ ਥੋੜੀ ਜਾਣ ਦੀ ਕਮਾਈ ਨਹੀਂ ਜੱਜ ਕਾਜ ਵਿਆਹ ਸੁਹਾਵੇ ਜਿਹੜੇ ਜੱਜ ਨੇ ਤੇ ਅੰਗ ਨੇ ਤੁਹਾਡੇ ਜਾਂ ਕਾਜ ਵਿਆਹ ਨੇ ਇਹ ਕਹਿੰਦੇ ਦਾਣਾ ਸੋ ਹੁੰਦਾ ਉੱਥੇ ਬਾਸ मास ਜੇ ਉਸ ਬਾਸ ਹੈ ਜਗ ਪੂਰ ਨਹੀਂ ਹੁੰਦਾ ਦਿਨਾਂ ਵਾਸਤੇ ਮੇਰਾ ਬਲੀ ਤੇ ਵਿਆਹ ਗ੍ਰੰਥ ਦੇ ਨਾਲ ਸਾਰੇ ਬਦਲ ਲੈ ਉਹਨਾਂ ਦੇ ਜੱਜ ਕਰ ਜਾਣ ਤੁਹਾਡੇ ਕਿਹਾ ਆ ਵੀ ਉਹ ਚੌਂਦੇਰੀ ਮਾਸ ਸਮਾਇਆ ਹੋਇਆ ਹੈ ਉੱਥੇ ਤਾਂ ਵਿਧਾਨ ਹੈ ਤੁਹਾਡੇ ਇਹ ਜਿਹੜੇ ਉਹ ਸੀ ਨਾ ਕਿਸੇ ਦੇ ਜਿਹਦੇ ਘਰ ਉਹਦੇ ਬੱਕਰਾ ਵੱਢਿਆ ਜਾਂਦਾ ਸੀ ਕਿਉਂਕਿ ਅਸਲ ਦੇ ਵਿੱਚ ਜਿਹੜਾ ਧਰਮ ਢਾਲਣਾ ਉੱਥੇ ਬਲੀਦਾਨ ਆਪਣਾ ਹੀ ਬਲੀਦਾਨ ਹੁਦਾਦਵੀ ਦਾ ਉਹਦੇ ਤੋਂ ਬੱਕਰਾ ਕਰਤਾ ਇਹਨਾਂ ਨੇ ਤਾਂ ਬਾਦਸ਼ਾਹ ਨੇ ਆਪਣੇ ਸਿਰੇ ਬੰਗਲੇ ਸਿੱਧੇ ਬੱਕਰਾ ਬੱਕਰਾ ਕਦੋਂ ਵੇਚੋ ਪਹਾੜੀਆਂ ਸੀ ਕਰਨਾ ਫਿਰ ਦੇਣਾ ਦੋ ਫਿਰ ਦਿੱਤੀ ਹੀ ਦੇ ਸਰ ਉਹਨਾਂ ਨੇ ਤਾਂ ਉਹਦਾ ਗਾਇ ਹਨ ਉਹ ਪੰਜ ਪਿਆਰਿਆਂ ਚ ਕੋਈ ਨਹੀਂ ਤੇ ਬੱਕਰਾ ਤਾਂ ਕਾਲਾ ਹੁੰਦਾ ਭਰਮ ਦਾ ਨਾਸ਼ ਕਰਨ ਦਾ ਪ੍ਰਤੀਕ ਨਹੀਂ ਸੀ ਭਰਮ ਦਾ ਨਾਸ਼ ਕਰਨ ਦਾ ਪ੍ਰਤੀਕ ਠੀਕ ਹੈ ਗੱਲ ਤਾਂ ਕਾਲਾ ਹੀ ਪ੍ਰਭਾਨ ਕਰਦਾ ਹਾਂਜੀ ਹਲਾਲ ਵਾਲੇ ਵੀ ਇਸ ਤਰ੍ਹਾਂ ਕਰਦੇ ਇਸਤਰੀ ਪੁਰਖ ਨਿਪਜੈ ਮਾਸੂਮ ਪਾਤਸ਼ਾਹ ਸੁਲਤਾਨਾ ਜੇ ਉਹ ਇਹ ਦਿਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ দান ਨਾ ਲੈਣਾ ਕਹੇ ਇਸਤਰੀ ਹੋਵੇ ਜਾਂ ਕੋਈ ਆਦਮੀ ਹੋਵੇ ਇਹ ਮਾਸ ਤੋਂ ਇਹਨਾਂ ਦੇ ਸਰੀਰ ਕਰਕੇ ਪੈ ਜਿਪਦੇ ਨੇ ਉਪਜਦਾ ਹੁੰਦ ਕਰਕੇ ਨਿਪਜਦਾ ਸਰੀਰ ਕਰਕੇ ਬਾਹਰ ਲੈ ਕਰਕੇ ਉਪਜਿਆ ਹੋਇਆ ਤਾਂ ਉੱਥੇ ਮਿਲ ਜਾਂਦਾ ਜਿੱਥੋਂ ਪੈਦਾ ਜੈਸੇ ਉਪਜੀ ਤਹਿ ਮਿਲੀ ਜਿੱਥੇ ਗਿਆ ਹੋਇਆ ਲਿਓ ਤਾਂ ਮਿਲਦਾ ਜਪਿਆ ਮਾਨੇਸਰ ਮਿੱਟੀ ਹੀ ਬਣਦੀ ਉੱਥੇ ਜਿੱਥੋਂ ਪੈਦਾ ਤੇ ਐਂ ਕਰਕੇ ਦੋਏ ਸ਼ਬਦਾਂ ਦਾ ਫਰਕ ਹੈ ਜਪਿਆ ਕਿ ਉਪਜੇ ਦੀ ਕਿਹਾ ਹੋਇਆ ਉਹ ਪਜਾ ਦੇ ਪਜਾ ਦੇ ਪਜਾ ਸਮਾਗ ਹੈ ਜਾਂ ਦੇ ਪਜਾ ਦਾ ਸਰੀਰ ਜਪਿਆ ਹੋਇਆ ਸਮਾ ਸਕਦਾ ਹੈ ਸਰੀਰ ਦੇ ਵਿੱਚ ਰਹਿੰਦੇ ਹੋਈ ਇਹ ਲਹਾ ਹੈਗਾ ਜਿਸ ਨੂੰ ਆਪਣੇ ਗੋਲ ਚ ਤਲ ਦੇ ਵਿੱਚ ਨਾ ਪਾਉਂਗਾ ਪਾਤਸ਼ਾਹ ਸੁਲਤਾਨ ਚਾਹ ਪਾਦਸ਼ਾਹ ਹੋਵੇ ਜਾਂ ਸੁਲਤਾਨ ਹੋਵੇ ਪਾਦਸ਼ਾਹ ਛੋਟੇ ਰਾਜੇ ਹੁੰਦੇ ਨੇ ਰਾਜੇ ਖ ਰਿਆਸਤਾਂ ਦੇ ਹੁੰਦੇ ਨੇ ਬਹੁਤ ਧਾਰੀਆਂ ਰਿਆਸਤਾਂ ਦੇ ਉੱਤੇ ਰਾਜਾਂ ਦੇ ਉੱਤੇ ਜਿਹੜਾ ਵੱਡਾ ਹੁੰਦਾ ਜਦੋਂ ਉਸ ਦਾ ਰਾਜਾ ਸੀ ਉਹ ਸੁਲਤਾਨ ਕਹਿੰਦੇ ਨੇ ਕਿ ਉਹ ਦੀਸਾਂ ਨਰਕੀ ਜਾਂਦੇ ਇਹ ਪੰਨਾ ਤੋਂ ਨੂੰ ਲੱਗਦਾ ਹੈ ਕਿ ਇਹ ਜਿਹੜੇ ਬਾਦਖਾਨੇ ਵਾਲੇ ਨੇ ਜੇ ਮਹਾਤੋ ਪੈਦਾ ਹੋਏ ਹੋਏ ਨਰਕਾਂ ਜਾ ਰਹੇ ਏ ਤੇ ਤਾਂ ਦਾਣ ਲੈਣਾ ਉਹਦਾ ਤਾਂ ਦਾਣ ਲੈਓ ਕਿਉਂਕਿ ਤਾਂ ਦਿੱਤਾ ਆਗਲਾ ਆਪਣੀ ਜਿਹੜੀ ਹੈ ਵਿਪਤਾ ਦੂਏ ਦੇ ਗੱਲ ਪਾਉਣ ਨੂੰ ਲੈ ਲਿਆ ਆਹ ਲੌੜੀ ਜੜ ਆਤੀ ਇੱਥੇ ਤਾਂ ਦਾਣ ਕਿਉਂ ਲੈ ਕੇ ਉਹਨਾਂ ਦਾ ਛੁਡਕਾਰਾ ਤੁਸੀਂ ਨਰਕ ਚਲੇ ਜਾਓਗੇ ਪਰ ਉੱਥੇ ਆ ਕੇ ਤੁਸੀਂ ਫਿਰ ਬਦਲ ਗੱਲ ਕਰੋ ਜੀ ਦਾ ਨਰਕ ਸੁਰਗ ਲੈnde ਦੇਖੋ ਇਹ ਧਿਆਣਾ ਆਪ ਨਾ 부ਝੇ ਲੋਕ ਖਰਾ ਸਿਆਣਾ ਦਿੰਦਾ ਨਰਕੀ ਦੇਣ ਵਾਲਾ ਦਾਨਤਾ ਨਰਕ ਜਾ ਰਿਹਾ ਲਿਖ ਦਿੱਤਾ ਉਹ ਕਹਿੰਦੇ ਨਰਕ ਜਾਣਗੇ ਬਾਹਰਲੇ ਵਾਲੇ ਦਾਨ ਵੀ ਭਾਵੇਂ ਦੇਈ ਵਾਲੇ ਸੁਰਗ ਨੂੰ ਜਾਣਗੇ ਦਾਨ ਦੇਖੋ ਧੱਕੇ ਚਾਈ ਅਗਲਾ ਆਪਣਾ ਤਾਂ ਆਪ ਵਾਸਤੇ ਕੰਡ ਕਰਦਾ ਜਦ ਪਾਪ ਤੁਰਨ ਦੇਤਾ ਉਹ ਤੁਹਾਡੇ ਤੇ ਚੱਲ ਗਿਆ ਜਾਂ ਫਿਰ ਉਹਦਾ ਵੀ ਲੱਗ ਗਿਆ ਤੇ ਫਿਰ ਜਦ ਪਾਪ ਕੋਰਨ ਕਰਦੇ ਪਾਪ ਲੈ ਹੈ ਦੀ ਇਹਦੇ ੱਟਕੇ ਛਾਈ ਹੈ ਤੁਹਾਡੀ ਮੇਹਿਮਾਨਦੀ ਹੈ ਫਿਰ ਇਹ ਡਰਖ ਵੀ ਉਹ ਸਾਨੂੰ ਕੋਈ ਇੱਤਾ ਦਾਲ ਵੀ ਲੈ ਲਿਆ ਆਪ ਸੁਰਗਰੂ ਚਲੇ ਗਏ ਦਾਲ ਵੀ ਦਿੱਤਾ ਨਹੀਂ ਲੈ ਆਈਏ ਇਹ ਫਿਰ ਸ਼ਾਸਤਰ ਦਾ ਜੋ ਲੇਖ ਹੈ ਉਸ ਤੋਂ ਬਾਅਦ ਤੁਸੀਂ ਤਾਂ ਉੱਤੇ ਬੱਗੀ ਹੋ ਫਿਰ ਨਾ ੱਟਕੇ ਥੋੜਾ ਹੱਥ ਦੀ ਪਾਵਰ ਹੈ ਫਿਰ ਵੱਡੀ ਜੇ ਪਾਵਰ ਹੋਵੇ ਕੱਲ ਨੂੰ ਤੁਹਾਡਾ ਰਾਜ ਹੋਵੇ ਤਾਂ ਤਾਂ ਪੜਨਾ ਜੇ ਸਿਕਾ ਹਾਲ ਕੇ ਪਾਉਗੇ ਸਾਰਿਆਂ ਦੇ ਤੇ ਜਿਹੜੇ ਪੜਦੇ ਉਹਨੂੰ ਮੰਨਿਆ ਕਰ ਜਿਹੜੇ ਨਹੀਂ ਅੜਦੇ ਸੋਤੇ ਵੀ ਉਹਨਾਂ ਦੀ ਅੱਖ ਖੋਲੋ ਇਹਨਾਂ ਤੇ ਕੀ ਕਰਾਂਗੇ ਆਪਨਾ 부ਝੇ ਲੋਕ 부ਝਾਏ ਭਾਂਡੇ ਖਰਾ ਸਿਆਣਾ ਬੜਾ ਸਿਆਣਾ ਆ ਆਪ 부ਝਦਾ ਨਹੀਂ ਸਾਥ ਸਮਝਦਾ ਨਹੀਂ ਲੋਕਾਂ ਨੂੰ ਪੜਾ ਰਿਹਾ ਗਲਤ ਪਾਠ ਿੱਡਾ ਖਰਾ ਸਿਆਣਾ ਪੜਦੋ ਆਪਣੇ ਮਤਲਬ ਦੀਆਂ ਗੱਲਾਂ ਰਾਂ ਦੇ ਸੀ প্রচার ਆਪਣੇ મતલબ ਦਾ ਕਹਦਾ ਲਿਖਿਆ ਹੋਇਆ ਕੁਝ ਹੋਰ ਆਪਣੇ ਮਤਲਬ ਦੇ ਅਰਥ ਕੱਢ ਰਿਹਾ ਖਰਾ ਸਿਆਣ ਕੋਤਾ ਸਿਆਣਾ ਬਣ ਰਿਹਾ ਖਰਦਾਰ ਪੱਟਾ ਆਤਾ ਉਹਦੇ ਨਾਲ ਕਪਟਕੀਤੀ ਕੀਤੀ ਹੈ ਫੜਨੇ ਨਾਲ ਜਿਹੜਾ ਮਾਸ ਮਾਸ ਦਾ ਝਗੜਾ ਕਰਦਾ ਆ ਜੋ ਫੇਰ ਦੀ ਛੱਡਦੇ ਹਾਂਜੀ ਪਾਂਡੇ ਤੂੰ ਜਾਣੇ ਹੀ ਨਹੀਂ असल ਦੇ ਵਿੱਚ ਪਾਂਡੇ ਤੂੰ ਬਿਲਕੁਲ ਅੰਨਾ ਆ ਗਿਆ ਦੀ ਐ ਤੂੰ ਜਾਣੇ ਹੀ ਨਹੀਂ ਤੂੰ ਬਿਲਕੁਲ ਨਹੀਂ ਜਾਣਦਾ ਮਾਸ਼ ਬਾਸ ਪੈਦਾ ਕਿਥੋਂ ਆ ਕਿਥੋਂ ਕਿਵੇਂ ਹੋਇਆ ਤੋ ਇਹ ਉਹ ਪਾਣੀ ਤੋਂ ਜਲਤੇ ਤੇਰਪਵਨ ਸਾਜਿਆ ਤੋਂ ਅੰਨਾ ਕਮਾਦ ਖਪਾਹਾ ਅੰਨਾ ਕਮਾਦ ਆ ਖਪਾਹਾ ਜਿਹੜਾ ਇਹ ਸਭ ਜੋ ਫਸਲਾਂ ਨੇ ਪਾਣੀ ਤੋਂ ਪੈਦਾ ਹੋਈਆਂ ਤੇਰਪਵਨੇ ਪਾਣੀ ਤੋਂ ਪੈਦਾ ਹੋਇਆ ਨਾਲੇ ਤੂੰ ਬਿਲਦਦਾ ਇਸ ਨਾਲ ਨੂੰ ਤੋਰਾ ਤੇਰਪਵਨ ਕਰਦਾ ਤੇਰਪਵਨ ਤੋਆ ਪੈਦਾ ਹੋਇਆ ਪਾਣੀ ਤੋਂ ਪੈਦਾ ਹੋਇਆ ਗੰਨੇ আর ਕਮਾਲ ਦੇ ਵਿੱਚ ਕੀ ਫਰਕ ਹੈ ਗੰਨਾ ਉਦੋਂ ਜਦੋਂ ਜਰਾਸ ਪੈਦਾ ਹੋ ਜਵੇ ਕਮਾਲ ਉਦੋਂ ਆ ਕਮਾਲ ਹੈ ਸੋ ਜੀ ਤੋਆ ਬਹੁਤ ਵਿਕਾਰਾ ਇਤੇ ਰਸ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਆ ਪਾਣੀ ਜੇ ਕਹੇ ਵੈਨਦਾ ਸਾਰਿਆਂ ਮੈਂ ਤਾਂ ਬਹੁਤ ਸ਼ੁੱਧਾ ਜੀ ਪਵਿੱਤਰ ਆਪਣੇ ਆਪ ਤਾਂ ਕੋਈ ਵਧੀ ਨੀ ਹੁੰਦਾ ਪਾਣੀ ਦਾ ਪੌਣੀ ਦਾ ਪਵਿੱਤਰ ਬੰਨੇ ਆਇਆ ਤੁਹਾਡਾ ਦੇਵਤਾ ਬੰਨੇ ਆਇਆ ਜਲ ਦੇਵਤਾ ਆਖੇ ਹਾਂ ਬਹੁਤ ਅੱਛਾ ਸਭ ਪ੍ਰਕਾਰ ਤੋਂ ਅੱਛਾ ਹੀ ਅੱਛਾ ਉਹ ਐ ਬਹੁਤ ਬਕਾਰਾ ਸਭ ਬਹੁਤ ਬਕਾਰਾ ਨੇ ਤੇ ਜੋ ਸਾਰਾ ਸੰਸਾਰ ਤੇ ਗੰਧ ਦੀਦਾ ਕਿੱਥੋਂ ਪਾਣੀ ਚੋਂ ਆਇਆ ਹੋਇਆ ਬਾਹ ਜੋ ਕੁਛ ਹੈ ਪਾਣੀ ਤੋਂ ਹੀ ਜੋ ਅਸੀਂ ਗਲਤ ਕਹਿੰਦੇ ਆ ਜੋ ਵੀ ਕੁਝ ਹੈ ਵਾਸਕ ਤਾਂ ਪਾਣੀ ਹੋਇਆ ਫਿਰ ਵਾਸ ਵਾਟ ਪਾਣੀ ਹੋਇਆ ਪੈਣਾ ਪਾਣੀ ਹੋਇਆ ਜਿਹੜੇ ਜੀ ਪਾਣੀ ਦੇ ਵਿੱਚ ਪੈਦਾ ਹੋਏ ਨੇ ਕਿੱਥੋਂ ਪੈਦਾ ਹੋਏ ਨੇ ਪਾਣੀ ਚੋਂ ਪੈਦਾ ਹੋਏ ਨੇ ਦਕਾਰ ਫਿਰ ਪਾਣੀ ਦੇ ਵਿੱਚ ਹੀ ਸੀ ਤੋਂ ਬਹੁਤ ਬਕਾਰਾ ਪਾਣੀ ਚ ਬਹੁਤ سارے ਬਕਾਰਾ ਤੇ ਰਸ ਛੋੜ ਹੋਵੇ ਸਦਿਆਤੀ ਨਾਨ ਤਾਹ ਵਿਚਾਰਾ ਕਹਿੰਦੇ ਜੇ ਤੂੰ ਸਦਿਆਤੀ ਹੋ ਗਿਆ ਆ ਤੇ ਨਹੀਂ ਖਾਂਦਾ ਤਾਂ ਫਿਰ ਪਾਣੀ ਛੱਡ ਦੇ ਇਹ ਨਾਨਕ ਦੇ ਵਿਚਾਰ ਨੇ ਫਿਰ ਤੈਨੂੰ ਬੰਨਾ ਗਿਆ ਸੀ ਸਤਿਆਸੀਆ ਪਾਣੀ ਉਹ ਛੱਡ ਕੇ ਦਿਖਾ ਤੇ ਪਾਣੀ ਪੀ ਲਿਆ ਤਾਂ ਮਾਰ ਸਾਰੇ ਹੀ ਕੋਈ ਬਾਤ ਛੜਿਆ ਹੀ ਨਹੀਂ ਪਾਣੀ ਪੀ ਲਿਆ ਹੋਜੀ ਪਾਣੀ ਪੀਤਾ ਹੈ ਇਸ ਕਰਕੇ ਕਿ ਜੀ ਸਾਰਾ ਕੁਝ ਪਾਣੀ ਤੋਂ ਬਿਨਾ ਹੋਏ ਨਹੀਂ ਸਕਦਾ ਬਿਲਕੁਲ ਤੇਰੇ ਪਾਣ ਜਿਹੜਾ ਸਾਜਿਆ ਪਾਣੀ ਤੋਂ ਹੀ ਸਾਜਿਆ ਨਾ ਪਾਣੀ ਪੀ ਲਿਆ ਤਿਰਪਾ ਭੰਗਾਈ ਭਰ ਗਾ ਲਿਆ ਤਿਰਪਾ ਬਣਦਾ ਕੀ ਭਾਵ ਹੈ ਜੀ ਦੁਪਹਿਰ ਦੇ ਵਿੱਚ ਘਰ ਵਾਲੇ ਦੇ ਸਰੀਰ ਉਹ ਦੁਪਹਿਰ ਦੇ ਵਿੱਚ ਦੇ ਜਦ ਸੁਖੀ ਹੋ ਜਾਂਦਾ ਇੱਕ ਕਿਸਮ ਦਾ ਉਤਰੇ ਤੇ ਚਲਾ ਜਾਂਦਾ ਸਰੀਰ ਹੁੰਦੇ ਹੋਏ ਵੀ ਸਰੀਰ ਦੇ ਨਾਲ ਨਹੀਂ ਹੈ ਉਹ ਉਹਨੂੰ ਬ੍ਰਹਮ ਦੇ ਰੂਪ ਚ ਜਿਤੇ ਕਲਪਨਾ ਕਰ ਚੁੱਕੀ ਜੀਵ ਦੀ ਜਿਤੇ ਕਲਯੂਕ ਨਹੀਂ ਹੈ ਇੱਕ ਘੜੀ ਦਾ ਮਿਲ ਤਾਂ ਕਲਯੂਕ ਹੁੰਦਾ ਜਿਹੜਾ ਮਿਲਿਆ ਹੋਇਆ ਉਹ ਦਿੱਤਾ ਉਹਨਾਂ ਦਾ ਓਪਰ ਚ ਨਕਰ ਜੁਬੀ ਚ ਪੁੱਤ ਤੇਜ ਮਤਿ ਰੱਖੇ ਓਪਰ ਤਾਂ ਹੈ ਦੀ ਦੂਆਪੁਰ ਹੈ ਉਹ ਤਾਂ ਘਰ ਪਰ ਉਥੇ ਤਾਂ ਹੈ ਦੀ ਤੇ ਕਲਜੁਬੀ ਚ ਬਿਧੀ ਹੈ ਜਦੋਂ ਤਾਂ ਇੱਕ ਘੜੀ ਨਾ ਮਿਲਤੇ ਤਾਂ ਕਲਜੋ ਹੁੰਦਾ ਤੇ ਕਲਜੋ ਵੀ ਨਹੀਂ ਹੈ ਤਾਂ ਫਿਰ ਤੇਰੇਤਾ ਹੀ ਹੈ ਉਥੇ ਕਿਹ ਐ ਸੱਜੂ ਗਾ ਕਹਿ ਲੋ ਸੱਜੂ ਗ ਤੇਰੇਤਾ ਹੀ ਹੁੰਦਾ ਸੁੱਤਾ ਹੋਇਆ ਤੇ ਤੋਹਦਾ ਜਾਗਦੇ ਦਾ ਸਜੂ ਹੋ ਜਾਂਦਾ ਤਿੰਨਾ ਪਵਣਾ ਚ ਜਲ ਕਿੱਥੇ ਤੋਇਓ ਕਿਵੇਂ ਆਇਆ ਇਹ ਇਹ ਦੱਸੋ ਇੱਕ ਤਾਂ ਗਰਭ ਤਾਂ ਹੈਗਾ ਸ਼ਰੀਰ ਦੇ ਵਿੱਚ ਹੀ ਤਾਂ ਬਗੜ ਬਦਲਦੇ ਨੇ ਲੋ ਅੱਛਾ ਜੀ ਜਦ ਫਰਮੇ ਪਾਸ਼ਾ ਕਹਿੰਦਾ ਇੱਕ ਕੜੀ ਨਾ ਮਿਲਤੇ ਤਾਂ ਕਲ ਜੋ ਹੁੰਦਾ ਦੇ ਵਿੱਚ ਤਾਂ ਕਲਪਨਾ ਹੋਈ ਨਹੀਂ ਸਕਦੀ ਉੱਥੇ ਤਾਂ ਛੱਡ ਦੋ ਤਾਂ ਅਟ ਕੱਢ ਦੋ ਤਾਂ ਦੁਆਪਰ ਹੈ ਦੁਆਪੁਰ ਆ ਉਹ ਪਹਿਲਾ ਪਰਬਾਰ ਦਾ ਹੈ ਹੁਣ ਉਹ ਅਵਸਥਾ ਹੁਣ ਹੋ ਜਾਣੀ ਹੈ ਜਿਹੜਾ ਸਤ ਸੰਤੋਖ ਤੇ ਧਾਇਰੇ ਚ ਆ ਗਿਆ ਪ੍ਰਭ ਗਿਆਨੀ ਜਿਹੜਾ ਹੋ ਗਿਆ ਆਤਮ ਦਰਸ਼ੀ ਗਿਆ ਤਾਰੂਪਰਾਤਾ ਪੂਰਨ ਬ੍ਰਭ ਹੋ ਗਿਆ ਇਹ ਕਹਿੰਦੇ ਜਿਹੜਾ ਉਹ ਸਰੀਰ ਦੇ ਨਾਲ ਮਾਇਆ ਨਾਲ ਜੁੜਿਆ ਹੋਇਆ ਵੀ ਮਾਇਆ ਦੇ ਨਾਲ ਨਹੀਂ ਕਲਪਨਾ ਉਹਦੇ ਉੱਧਰ ਹੈ ਜੀ ਠੀਕ ਹੈ ਉਹ ਤਿੰਨਾਂ ਭਾਵਨਾਾਂ ਚ ਹੈਗਾ ਜਲ ਜਲ ਦਾ ਨਿਵਾਸ ਹੈਗਾ ਜਾਂ ਤਰਵਾਸ ਹੈ ਜੋ ਸੀਤਾ ਹੈ ਉਹਦੇ ਕੋਲ ਠੀਕ ਉਹ ਕਹਿੰਦੇ ਨੇ ਭੇਦ ਨਾ ਜਾਣ ਨੂੰ ਉਸਦੇ ਆਹ ਕਹਤਾ ਉਹ ਹੈ ਤਾਂ ਵਿੱਚ ਮਾਇਆ ਦੇ ਜੋ ਹਾਂ ਜੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਦ ਮਾਹੇ ਸਮਾਇਆ ਉਹ ਗਾਹ ਕਹ ਮਾਂ ਕੀ ਆੱਖਾਂ ਇੱਕ ਜੀਵ ਮੈਂ ਤਾਂ ਇੱਕ ਜੀਵ ਹਾਂ ਬੱਸ ਕੀ ਆਖ ਸਕਦਾ ਤੇਰਾ ਆਸਾਂ ਨਾ ਕਿ ਨਹੀਂ ਪਾਇਆ ਤੇਰਾ ਤਾਂ ਕਿਸੇ ਨੂੰ ਨਹੀਂ ਲੱਭਾਇਆ ਮੈਂ ਕੁਝ ਨਹੀਂ ਆਖ ਸਕਦਾ ਇਹ ਅੰਤ ਪਾਉਣੇ ਵਾਲੀ ਗੱਲ ਨਹੀਂ ਹੈ ਪਰਮੇਸ਼ਰ ਬਾਰੇ ਮੈਂ ਕੁਝ ਨਹੀਂ ਕਿਹਾ ਮੈਂ ਤਾਂ ਆਹ ਦੱਸਿਆ ਕੋਈ ਇਹ ਜਿਹੜੇ ਮਾਸ ਮਾਸ ਕਰਦੇ ਨੇ ਇਹ ਇਹਨਾਂ ਦਾ ਆਧਾਰ ਕੀ ਹੈ ਕਰਨ ਤੇਰੇ ਨਾਲ ਕੋਈ ਸ੍ਰੀਖਾ ਦੀ ਮੇਰਾ ਤੇਰੇ ਅੱਗੇ ਤਾਂ ਮੈਂ ਕੁਝ ਨਹੀਂ ਹੈਗਾ ਤੇ ਮੇਰੇ ਅੱਗੇ ਮੈਂ ਕੁਝ ਨਹੀਂ ਹੈਗਾ ਹਾਂਜੀ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਇ ਸਮਾਇਆ ਇਹਨਾਂ ਸੱਚਾ ਸ਼ਬਦ ਵਿਚਾਰ ਲਿਆ ਸੱਚ ਦੀ ਬਾਣੀ ਵਿਚਾਰ ਲਈ ਸੱਚ ਦਾ ਉਪਦੇਸ਼ ਵਿਚਾਰ ਲਿਆ ਉਹ ਤੈਰੇ ਵਿੱਚ ਗਿਆ ਆਪਣੇ ਵਿੱਚ ਸਮਾ ਗਿਆ ਆਪਣੇ ਗੌਰ ਵਿੱਚ ਸਮਾ ਗਿਆ ਇਹ ਸ਼ਬਦ ਦੇ ਸਮਾ ਗਿਆ ਭਗਵਾਨ ਵੇਸ ਕਰ ਭਰਮ ਦੇ ਬਿਨ ਸਤਗੁਰ ਕਿਨੇ ਪਾਇਆ ਦੇਸ ਦੇ ਸੰਤਰ ਭਾਵ ਥਕੇ ਤੁਧ ਅੰਦਰ ਆਪ ਲੁਕਾਇਆ ਇੱਕ ਭਾਵਾਂ ਪੇ ਬਣਾ ਲੇਦੇ ਨੇ ਭਾਵਾਂ ਨੇ ਕੱਪੜੇ ਪਾ ਲੇਦੇ ਕਰ ਭਰਮ ਦੇ ਭਰਮ ਦੇ ਵਿੱਚ ਤੁਰੇ ਫਿਰਦੇ ਨੇ ਸੰਤ ਹੋ ਸਾਧੂ ਭਰਮ ਦੇ ਨੇ ਤੁਰੇ ਫਿਰਦੇ ਭਰਮੇ ਭੂਲਾ ਦੇਦੇ ਸਦਾ ਦੇਦੇ ਸਤ ਹੁੰਦੇ ਫਿਰਦੇ ਨੇ ਭਰਮ ਦੇ ਵਿੱਚ ਕੁੱਲੇ ਹੋਏ ਵੀ ਸੰਤ ਅਸੀਂ ਬਣ ਗਏ ਪਿੰਨ ਸਤਗੁਰ ਕਿਹਨਾ ਨਾ ਪਾਇਆ ਸਤਗੁਰ ਦੇ ਸੱਚ ਦੇ ਗਿਆਨ বিনা ਆਇਆ ਸਤਗੁਰ ਤੋਂ ਸੱਚਾ ਗਿਆਨ ਲਏ ਵੀਰੋ ਸਤਪੁਰਤਾ ਉਹ ਐਨਰਜੀ ਦੇ ਸਤਪੁਰਖ ਜਾਣ ਲਿਆ ਸਤਪੁਰਖ ਜਾਣਿਆ ਹੋਇਆ ਜਿਹੜਾ ਬੰਦਾ ਹੈ ਕਿ ਉਹ ਮਿਲ ਜਵੇ ਉਹਦੇ ਨਾਲ ਇਹ ਸਹਿਮਤੀ ਜाहिर ਕਰੇ ਉਹਦੇ ਉਹਦੇ ਵਾਲਾ ਗਿਆਨ ਲੈ ਲਵੇ ਤਾਂ ਕੁਝ ਪ੍ਰਾਪਤੀ ਹੈ ਬੰਦੇ ਨੂੰ ਵੀ ਪ੍ਰਾਪਤੀ ਨਹੀਂ ਪਰ ਹਮਾ ਬਣਾਉਣ ਨਾਲ ਕੋਈ ਪ੍ਰਾਪਤੀ ਨਹੀਂ ਤੇ ਨਾਲ ਕਿਸੇ ਨਾਲ ਵੀ ਕੋਈ ਪ੍ਰਾਪਤੀ ਨਹੀਂ ਗੁਰਬਾਣੀ ਦੀ ਸੋਝੀ ਨਾਲ ਪ੍ਰਾਪਤੀ ਹੈ ਗੁਰਬਾਣੀ ਦੀ ਸੋਝੀ ਹੀ ਪ੍ਰਾਪਤੀ ਹੈ ਉਦਿ ਦੀ ਪ੍ਰਾਪਤੀ है। फिर ਮੰਨਣ ਨਾਲ ਜਿਹੜਾ ਹੈ ਸੰਕਟ ਪਟੇ ਜਾਂਦੇ ਨੇ। ਸੋ ਜਿਹਨਾਂ ਦਾ ਗਿਆਨ ਦੀ ਪ੍ਰਾਪਤੀ ਹੈ ਪੰਨਾ ਨਾਲ ਫਿਰ ਛੁਟਕਾਰਾਈ ਹੈ। ਸੋ ਜੀ। ਦੇਸ ਦੇ ਸੰਤਰ ਭਾਵ ਥੱਕੇ ਤੁਧ ਅੰਦਰ ਆਪ ਲੁਕਾਇਆ। ਦੇਸ ਦੇ ਸੰਤਰ ਜਿਹੜੇ ਥੱਕ ਗਏ ਵਿਚਾਰੇ ਬਾਹ ਢੋਲਦੇ ਨੇ ਜੇ ਫੇਕ ਨੂੰ ਸਮਝ ਲੈਣੇ ਤੂੰ ਅੰਦਰ ਵਾਰ ਕੀ ਕਰਦੇ ਫਿਰਦੇ ਨੇ ਫਿਰ ਉਹ ਆਪਣੇ ਅੰਦਰ ਉਹ ਖੋਜਿਆ ਕਿਸੇ ਦੀ ਬਾਹ ਢੋਲ ਤੇ ਪਰਮ ਤੇ ਭੁੱਲੇ ਬਾਹ ਢੋਲਦੇ ਫਿਰਦੇ ਠੀਕ ਹੈ ਜੀ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਇਹ ਗੁਰਕਾ ਸ਼ਬਦ ਹੈ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਜਿੱਤੇ ਰਤਨ ਜਿੱਤੇ ਰਤਨ ਹੁੰਦਾ ਜੋਰ ਬਾਣ ਕੋ ਇਹਦੇ ਵਿੱਚ ਗੁਰਦੇ ਜਿਹੜੇ ਜਿੱਤੇ ਚਾਨਣ ਕਰਦੇ ਨੇ ਅੰਦਰ ਇਹਨਾਂ ਨਾਲ ਚੱਲਦਾ ਜਿੱਤੇ ਰਤਨ ਤਾਂ ਚਾਨਣ ਵੀ ਹੋ ਜਾਂਦਾ ਗੁਰਕਾ ਸ਼ਬਦ ਜਿੱਤੇ ਬਸ ਜਿਵੇਂ ਉਹਦੇ ਅੰਦਰ ਚਾਨਣ ਹੋ ਜਾਂਦਾ ਗਿਆਨ ਦਾ ਰਤਨ ਹੈ ਕਰੀ ਚਾਨਣ ਇਹਦਾ ਚਾਨਣ ਕਰੀ ਅੰਦਰ ਆਪਣੇ ਜਿਹਨੇ ਚਾਨਣ ਕਰ ਲਿਆ ਆਪ ਦਿਖਾਇਆ ਉਹ ਨੂੰ ਆਪਣਾ ਆਪਾ ਦਿੱਸਿਆ ਆਪਣਾ ਆਪ ਦਿਖ ਆਇਆ ਆਪਣਾ ਆਪਾ ਦਿੱਸ ਗਿਆ ਉਹ ਨੂੰ ਆਪਣਾ ਆਪ ਪਛਾਣਿਆ ਫਿਰ ਉਹਨੇ ਆਪ ਆਤਮ ਦਿੱਤੀ ਹੋਇਆ ਆਪਣਾ ਆਪ ਪਛਾਣਿਆ ਪਹਿਲਾਂ ਤਾਂ ਸਰੀਰ ਹੈ ਬੁਲਦਾ ਰਿਹਾ ਆਪਣੇ ਆਪ ਨੂੰ ਸਰੀਰ ਦੇ ਉਹ ਪਰਮਾਤਮਾ ਚੱਲ ਰਹੀ ਉਹਨਾਂ ਦੇ ਅੰਦਰ ਹੁੰਦਾ ਗੁਰਬਾਣੀ ਨਹੀਂ ਉਹਨਾਂ ਦੀ ਗੁਰਦੀ ਹੋ ਹੋਰੇ ਕੁਝ ਬੰਦੀ ਬੈਠੇ ਬਾਹਰ ਨੂੰ ਕੋਸ਼ਿਸ਼ ਕਰੀ ਜਿਹੜੇ ਕਹਿੰਦੇ ਬਾਹਰੋਂ ਦਰਸ਼ਨ ਹੁੰਦਾ ਤਾਂ ਵੈਰੀਆਂ ਕਹਾਣੀਆਂ ਆਪਣਾ ਯੋਜੇ ਇਹ ਦੋਦੀਆਂ ਭਗਤਾਂ ਨਾਲ ਵੀ ਜੋੜਤੀ ਬਾਦ ਨੂੰ ਦਰਸ਼ਉਂਦੀਆਂ ਧਰੇ ਨਾਲ ਜੋੜਤੀਆਂ ਸਰਵਾਜਨਾ ਤੂ ਨਾ ਸਾਰਿਆਂ ਨੂੰ ਜੋੜੀ ਹੋਈ ਜੁੜਦੀ ਹੁਣ ਆਪਣਾ ਆਪ ਪਛਾਣ ਲਈ ਗੁਰਬੱਤੀ ਸੱਚ ਸੁਭਾਅ ਆਪਣਾ ਪਛਾਣ ਲਿਆ ਗੁਰੂ ਦੇ ਮਤ ਲੈ ਕੇ ਸੱਚ ਵਿੱਚ ਸਮਾ ਗਿਆ ਸਤ ਸਰੂਪ ਇਹਦਾ ਅੰਦਰਲਾ ਸਤ ਆਤਮਾ ਵਿੱਚ ਸਮਾ ਗਿਆ ਜੋ ਆਵਾ ਗੌਣ ਬਜਾਰੀਆਂ ਬਾਜ਼ਾਰ ਜਿਨੀ ਰਚਾਇਆ ਇਕ ਥੇਰ ਸੱਚਾ ਸਲਾਹਣਾ ਜਿਨ ਮਨ ਸੱਚਾ ਪਾਇਆ ਅਵਾਰ ਗਾਉਂ ਬਜਾਰੀਆਂ ਆਹ ਇਹ ਬਜਾਰੀਆਂ ਨੇ ਨਾ ਬਜਾਰੀਆਂ ਕੌਣ ਨੇ ਜਿਹਨੇ ਦੁਕਾਨਾਂ ਬਣਾਈਆਂ ਨੇ ਇਹ ਨਾਨੇ ਸਰੂ ਨੂੰ ਬਣਾਇਆ ਹੈ ਇਹ ਬਜਾਰੀਆਂ ਨੇ ਤਾਂ ਬਜਾਰ ਹੈ ਦਾ ਦੁਕਾਨਾਂ ਬਣਾਈ ਹੋਈਆਂ ਨੇ ਬਜਾਰੀਆਂ ਬਾਜ਼ਾਰ ਜਿਨ੍ਹਾਂ ਨੇ ਚਾਇਆ ਨੇ ਬਾਜ਼ਾਰ ਬਣਾਇਆ ਹੋਇਆ ਉਹਨਾਂ ਮੁਸੱਲਿ ਬਣਾਏ ਹੋਏ ਉਹ ਤਾਂ ਗੁਰਦੁਆਰੇ ਬਣੇ ਹੋਏ ਨੇ ਉਹ ਤਾਂ ਢੇਰੇ ਬਣਾ ਲਏ ਤੇ ਬਾਜ਼ਾਰ ਹੈ ਸਭ ਬਾਜ਼ਾਰ ਦੀ ਨਹੀਂ ਰਚਾਇਆ ਕਰਨੂ ਧੰਦਾ ਬਣਾਇਆ ਜਿਹਨਾਂ ਨੇ ਇੱਕ ਫਿਰ ਸੱਚਾ ਸੱਚਾ ਲਹਣ ਸੱਚਾ ਜਿਹੜਾ ਇੱਕ ਫਿਰ ਹੈ ਸੱਚਾ ਐ ਉਹਦੀ ਸਿੱਖਿਆ ਕੋਣ ਕਰਦਾ ਉਹ ਕਰਦਾ ਜਿਹਦੀ ਮਾਨਾ ਸੱਚਾ ਪਾਇਆ ਇਹਨਾਂ ਦੇ ਉਹ ਸੱਚਾ ਜਿਹੜਾ ਹੈ ਸੱਚਿਆ ਦਾ ਸੱਚਾ ਕੋਣ ਨੂੰ ਸੱਚਾ ਸਤਗੁਰ ਸੱਚਾ ਸਤਗੁਰ ਕੀ ਕਰੇ ਜੇ ਸੱਚਾ ਸ਼ਬਦ ਸੱਚੇ ਸਤਗੁਰ ਵਾਸਤੇ ਹੈ ਸੱਚੇ ਸਤਗੁਰ ਦੀ ਗੱਲ ਜਿਹਨਾਂ ਨੂੰ ਚੰਗੀ ਲੱਗ ਗਈ ਉਹ ਇੱਕ ਫਿਰ ਜਿਹੜਾ ਸੱਚਾ ਉਹਦੀ ਵਿਸਥਿਤੀ ਕਰਦਣਾ ਕਿਸੇ ਆਦਮੀ ਦੀ ਨਹੀਂ ਕਰਦੇ ਫਿਰ ਸਾਰੇ ਇੱਕ ਦਿਓ ਕਰ ਦਿੰਦੇ ਹੋਰ ਨਹੀਂ ਹੋਰ ਨਹੀਂ ਕਿਸੇ ਦੀ ਕਰਦੇ ਰਚਨਾ ਦੇ ਵਿੱਚ ਕਿਸੇ ਦੀ ਨਹੀਂ ਕਰਦੇ ਜਿਹਦਾ ਉਹਨੇ ਪੈਦਾ ਕੀਤਾ ਹੈ ਰਚਨਾ ਹੈ ਉਹਦੀ ਸਿਫਤ ਵਾਲੀ ਕਰਦੇ ਜਿਹਨੇ ਜਨਮ ਲਿਆ ਉਹਦੀ ਸਿਫਤ ਵਾਲੀ ਕਰਦੇ ਚਾਹੇ ਕੋਈ ਵੀ ਹੋਵੇ ਜਿਹਨੇ ਜਨਮ ਦੇਣ ਵਾਲੇ ਦੀ ਕਰਦੇ ਜਿਹੜਾ ਸਭ ਨੂੰ ਪੈਦਾ ਕਰਨ ਵਾਲਾ ਉਹਦੀ ਕਰਦੇ ਬਿਲਕੁਲ ਹਾਂਜੀ ਠੀਕ ਹੈ ਜੀ ਇੱਥੇ 25ਵੀਂ ਪੌੜੀ ਸਮਾਪਤੀ ਹੈ ਜੀ